ਬੰਦੇ ਵੀ ਨਹੀਂ ਸੀ ਕੁਝ ਕੁਝ ਖਾਸ ਬੇੜਾ ਸੀ ਉਹ ਸਮਾਂ ਸੀ ਸਰਕਾਰ ਕਹਿੰਦੀ ਸੀ ਰਜਿਨਾਵਾ ਕਰ ਲੋ ਇਹ ਕਰ ਲੋ ਉਹ ਕਰ ਲੋ ਉਥੇ ਮਤ ਭੇਰ ਪੈਦਾ ਹੋ ਗਈ ਸੀ ਰਜਿਨਾਵਾ ਕਰ ਲੈਣਾ ਚਾਹੀਦਾ ਇਹਨੇ ਹੀ ਕਰ ਲੈਣਾ ਚਾਹੀਦਾ ਕਸਮ ਬਾਸ਼ਾ ਕਹਿੰਦੇ ਰਜਿਨਾਵਾ ਨਹੀਂ ਕਰ ਰਹੇ ਅੰਦਰੋਂ ਭਾਵੇਂ ਉਹ ਕਹਿੰਦਾ ਪਰ ਇਹਨਾਂ ਨੇ ਆਪਣੇ ਤੇ ਹਮਲਾ ਕਰ ਉਹ ਕਹਿੰਦੇ ਸੀ ਨਹੀਂ ਕਰਦੇ ਦੋ ਵਲਾਂ ਦਾ ਮਤਬੇ ਸੀ ਉਥੇ ਮਤਬੇ ਇੱਕ ਕ੍ਰੀਏਟ ਹੋ ਗਿਆ ਸੀ ਹਾਂ ਉਹ ਮਤਬੇਦਾਰ ਕਾਉਂਡ ਚ ਵੀ ਆਉਂਦਾ ਹੈ ਪਾਪੇ ਰਿਕਾਰਡ ਜਿਹੜੀਆਂ ਗਏ ਉਹ ਪਹਿਲਾਂ ਸਲੋਕ ਮਹੱਲਾ ਤੀਜਾ ਰਾਮ ਰਾਮ ਕਰਤਾ ਸਭ ਜੱਗ ਫਿਰੈ ਰਾਮ ਨਾ ਪਾਇਆ ਜਾਏ ਆਗਮੋ ਅਗੋਚਰ ਅਤ ਵੱਡਾ ਅਤੋਲਨ ਤੁਲਿਆ ਜਾਏ ਕੀਮਤ ਕਿਨੇ ਨਾ ਜਾਏ ਗੁਰ ਕਾ ਸ਼ਬਦ ਹੀ ਆਏ ਨਾਨਕ ਆਪ ਅਮਯੋ ਹੈ ਕਿਰਪਾ ਤੇ ਰਿਹਾ ਸਮਾਏ ਆਪੇ ਮਿਲਿਆ ਮਿਲ ਰਿਹਾ ਆਪੇ ਮਿਲਿਆ ਆਏ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ 555 ਉਤੇ ਅੰਕਿਤ ਹੈ ਇਹ ਗੱਲ ਸਾਫ਼ ਹੈ ਕਿ ਦੁਨੀਆ ਦੀਆਂ ਮੱਤਾਂ ਸਾਰੀਆਂ ਇੱਕ ਪਾਸੇ ਨੇ ਦੁਨੀਆ ਦੀਆਂ ਮੱਤਾਂ ਲਾਹਜ਼ਰ ਕਰਦੇ ਹਾਂ ਦੁਨੀਆ ਦੁਨੀਆ ਦੀਆਂ ਮੱਤਾਂ ਤੋਂ ਭਾਵ ਹੈ ਜਿਹੜੇ ਦੁਨੀਆ 'ਚ ਜੰਮ ਕੇ ਲੋਕ ਜਨਮ ਲੈ ਕੇ ਜਿਨ੍ਹਾਂ ਨੇ ਮੱਤਾਂ ਬਣਾਈਆਂ ਨੇ ਆਪਣੀ ਬੁੱਧੀ ਦੇ ਲੈਵਲ ਤੇ ਜਿਨ੍ਹਾਂ ਨੂੰ ਗੁਰਮਤ ਵਿੱਚ ਮਨਮਤ ਕਿਹਾ ਹਾਂ ਉਹ ਇੱਕ ਪਾਸੇ ਖੜੀਆਂ ਨੇ ਗੁਰਮਤ ਸਾਰਿਆਂ ਦੇ ਦੂਸਰੇ ਪਾਸੇ ਖੜੀਆਂ ਕਲਦੀ ਗੁਰਮਤ ਪਾਵੇਂ ਗੁਰਮਤ ਨੂੰ ਪ੍ਰਗਟ ਕਰਨ ਵਾਲੇ ਇੱਕ ਤੋਂ ਵੱਧ ਬੰਦੇ ਨੇ ਬਾਹਰ ਬੰਦੇ ਰਹੇ ਇਹਦੇ ਵਿੱਚ ਵੀ ਕੋਈ 35 ਕਹਿੰਦਾ ਕੋਈ 63 ਕਹਿੰਦਾ ਜਿਨ੍ਹਾਂ ਦੀ ਬਾਣੀ ਸਾਡੇ ਕੋਲ ਉਹ ਤੋਂ ਪਹਿਲਾਂ ਜਿਹੜੀ ਕਬੀਰ ਨੇ ਪੜ੍ਹੀ ਹੈ ਵਰੰਤ ਜਿਹਨਾਂ ਦੇ ਇੱਥੇ ਨਾਮ ਆਉਂਦੇ ਨੇ ਆਪਣੇ ਕੋਲ ਉਹ ਕਿਸੇ ਹੋਰ ਬੋਲੀ ਵਿੱਚ ਨਹੀਂ ਉਹ ਵੀ ਨਹੀਂ ਇਹ ਹੁੰਦਾ ਹੀ ਆਇਆ ਧਰਮ ਚੱਲਿਆ ਆਇਆ ਇਹ ਨਵਾਂ ਧਰਮ ਫੂ ਬੂ ਇਹ ਹੀ ਗੱਲ ਹੁੰਦੀ ਹੈ ਜਦ ਵੀ ਇਹ ਵਰਮਤ ਪ੍ਰਗਟ ਹੁੰਦੀ ਹੁੰਦੀ ਹੈ ਬੇਦ ਵਿੱਚ ਵੀ ਇਹ ਗੱਲ ਹੈ ਪਰ ਜਿਹੜੇ ਦੂਜੇ ਧਰਮ ਨੇ ਉਹ ਅਲੱਗ-ਅਲੱਗ ਵੈਰਾਈਟੀਆਂ ਦੇ ਇੱਕ ਵੈਰਾਈਟੀ ਜੇ ਖਤਮ ਹੁੰਦੀ ਆ ਤਾਂ ਦੂਈ ਵੈਰਾਈਟੀ ਬਣ ਜਾਂਦੀ ਹੈ। ਕਈ ਵਾਰ ਉਹਦੀ ਕਾਪੀ ਵੀ ਫਿਰ ਸ਼ੁਰੂ ਕਰ ਲੈਂਦੇ ਨੇ ਲੋਪੜ ਕੇ। ਜਿਹੜਾ ਲੋਈਂ ਦੀ ਤਾਹਲ ਹੁੰਦੀ ਧੀਰੀ ਵਤਨਾਉਣ ਜੋਗੀ। ਪਰ ਬੜੌਣੀ ਹੁੰਦੀ ਏ। ਉਹ ਫਿਰ ਨਕਲ ਕਰ ਲੈਂਦੇ ਨੇ। ਜੋੜ ਜਿਹੜੇ ਕਹਿੰਦੇ ਨੇ 84 ਯੂਨੀਅਰ ਜਿਹੜੇ ਬ੍ਰਹਮ ਕੁਮਾਰੀ ਦਾ ਧਰਮ। ਉਹ ਪਹਿਲਾਂ ਵੀ ਇਹ ਜੇ ਬਤਨ ਜਿਹੜੀਆਂ ਕਹਿੰਦੀਆਂ ਨੇ। ਪੂਛ ਲੋਕ ਇਹ ਕਹਿੰਦੇ ਨੇ ਜੰਮਲਵਰ ਨਹੀਂ ਪਹਿਲਾਂ ਵੀ ਧਰਮ ਇਹ ਜ ਹੈਗਾ ਨਹੀਂ ਇਹ ਕਹਿੰਦੇ ਰਹੇ ਨੇ ਇਸਲਾਮ ਕਹਿੰਦਾ ਹੈ ਜੰਮਲਵਰ ਨਹੀਂ ਜਨਮ ਹੈ ਦੂਆ ਜਨਮ ਨਹੀਂ ਇਸਲਾਮ ਵੀ ਮੰਨਦਾ ਹੈ ਇਸ ਗੱਲ ਨੂੰ ਮੈਂ ਦੂਆ ਜਨਮ ਹੈ ਨਹੀਂ ਇਸਾਈ ਮਤ ਵੀ ਦੂਏ ਜਨਮ ਨੂੰ ਨਹੀਂ ਮੰਨਦਾ ਤਾਂ ਪੈਸਾਈ ਮਤ ਇਸਲਾਮ ਵਿੱਚ ਬਹੁਤਾ ਫਰਕ ਨਹੀਂ ਹੈ ਦੂਏ ਜਨਮ ਨੂੰ ਹਿੰਦੂਸਾਂ ਆਂਦੀਆ ਮੱਤਾਂ ਦੇ ਜਿਹੜੀਆਂ ਜਿਨ੍ਹਾਂ ਨੂੰ ਹਿੰਦਵਾਣੀਆਂ ਕਿਹਾ ਹੋਇਆ ਉਹ ਵੰਡੀਆਂ ਸਾਰੀਆਂ ਕੌਮਾਂ ਬਣ ਬੱਤਾਂ ਇਹ ਗੁਰਮਤ ਦੇ ਗਿਆ ਬਣਾਇਆ ਹੋਇਆ ਮਨਪੀਣੇ ਕੋਈ ਕਹੇ ਗੁਰਮਤ ਕਦੇ ਵੀ ਹਿੰਦੁਸਤਾਨ ਤੋਂ ਬਾਹਰ ਨਹੀਂ ਫਲਣਡ ਜਿੰਨੀ ਸਾਡੇ ਕੋਲ ਭਾਸ਼ਾ ਹੈਗੀ ਹੈ ਵੇਦਾਂ ਤੋਂ ਪਿੱਛੇ ਦਾ ਸਾਨੂੰ ਕੋਈ ਪਤਾ ਨਹੀਂ ਕੀ ਸੀ ਵੇਦ ਸਾਰੇ ਹਿੰਦੁਸਤਾਨ 'ਚ ਲਿਖਿਆ ਗਿਆ ਜੀ ਵੇਦਾਂ ਤੋਂ ਬਾਅਦ ਹੀ ਸਾਡਾ ਸ਼ੁਰੂ ਹੁੰਦਾ ਹੈ ਜਾਂ ਵੇਦਾਂ ਤੋਂ ਪਿੱਛੇ ਬਾਣੀ ਵੀ ਗੱਲ ਨਹੀਂ ਕਰਦੀ ਵੇਦ ਕਹਿੰਦੇ ਨੇ ਪਹਿਲੇ ਜੁਬਾਨੀ ਯਾਦ ਰੱਖਣੇ ਬਹੁਤ ਦੇ ਜੁਬਾਨੀ ਚੱਲਦੇ ਸੀ ਕਾਗਜ਼ ਹੁੰਦਾ ਨਹੀਂ ਸੀ ਪੱਥਰਾਂ ਉੱਤਰਾਂ ਤੇ ਲਿਖਦੇ ਰਹੇ ਫਿਰ ਬਾਅਦ ਪੱਥਰਾਂ ਤੇ ਲਿਖ ਲੈਂਦੇ ਸੀ ਜਾਇਜਾ ਸਭਾ ਹੁੰਦਾ ਫਿਰ ਕਹਿੰਦੇ ਨੇ ਪੋਚ ਪੱਥਰਾਂ ਤੇ ਲਿਖਣ ਲੱਗੇ ਫਿਰ ਬਹੁਤ देर ਬਾਅਦ ਕਾਗਜ਼ ਬਣ ਗਿਆ ਉਦੋਂ ਦਾ ਕਾਗਜ਼ ਹੈ ਉਹ ਤੇ ਬਹੁਤ ਕੁਝ ਬਣ ਗਿਆ ਸਾਡੇ ਕੋਲ ਵੇਚ ਤੋਂ ਪਹਿਲਾਂ ਦਾ ਕੋਈ ਰਿਕਾਰਡ ਨਹੀਂ ਸਾਨੂੰ ਕੁਝ ਅਬ दुनिया सी ਇਹਦੇ ਚ ਕੋਈ ਪਰ 베ਦ ਤੋਂ ਬਰਾਬਰ ਦਾ ਹੈ 베ਦ ਦੀ ਉਮਰ ਦਾ ਕੋਈ ਹੋਰ ਧਾਰਮਿਕ ਗ੍ਰੰਥ ਨਹੀਂ ਹੈ ਜਿਹੜਾ ਗੁਰਬਾਣੀ ਦੀ ਗੱਲ ਕਰੇ ਗੁਰਬਾਣੀ ਨੂੰ ਚਿਰਣਾ ਕਹਿੰਦੇ ਹੈ ਚਿਰਣਾ ਚਿਰਣੀ ਮਤ ਹੈ ਚਿਰਣ ਚਿਰੰਕਾਲ ਤੋਂ ਚਿਰੰਕਾਲ ਤੋਂ ਆਦਮਤਰੀ ਹੈ ਆਦਮਤ ਵੀ ਇਹਨੂੰ ਇਹ ਮਤ ਆਰਗਵਤ ਹੈ ਆਰਗਵਤ ਕਿਵੇਂ ਇਹ ਹੁਕਮ ਦੀ ਵਿਆਖਿਆ ਹੈ ਸਾਡੇ ਕੋਲ ਹੁਕਮ ਦੀ ਵਿਆਖਿਆ ਨੂੰ ਕਰਵਾ ਤੇ ਹੁਕਮ ਨਾਲ ਸ੍ਰਿਸ਼ਟੀ ਪੈ ਰਹੀ ਹੈ ਹੁਕਮ ਨਾਲ ਸ੍ਰਿਸ਼ਟੀ ਪੈ ਰਹੀ ਹੈ ਹੁਕਮ ਆਦਿ ਸ੍ਰਿਸ਼ਟੀ ਦਾ ਆਦਿ ਹੈ ਔਰ ਹੁਕਮਦਾਰ ਕੀ ਹੈ ਹੁਕਮਦਾਰ ਜੋ ਪਾਣੀ ਲਹਿਰ ਦਾ ਹੁਕਮ ਲਹਿਰ ਹੁਕਮ ਲਹਿਰ ਪਹਿਲਾਂ ਪਾਣੀ ਕਿ ਕਹਿਆ ਸੀ ਪੁੱਤਰ ਕਿ ਕਹਿਆ ਹੈ ਲਹਿਰ ਪਹਿਲਾਂ ਵਿੱਚ ਉਹਣੀ ਲਹਿਰ ਹੈ ਲਹਿਰ ਦਾ ਆਦ ਪਾਣੀ ਹੈ ਔਰ ਸ੍ਰਿਸ਼ਟੀ ਦਾ ਆਦ ਲਹਿਰ ਹੈ ਆਦ ਸੱਚ ਸਾਨੂੰ ਪਾਣੀ ਨੂੰ ਕਹਿਣਾ ਚਾਹੀਦਾ ਜੇ ਸਤਜੋਗ ਹੈ ਨਾ ਜੇ ਸੁਣ ਸੁਵਾਦ ਲਗਾਏ ਦਾ ਕਹਨੇ ਆਸੀ ਉਹ ਤਾਂ ਪਾਣੀ ਹੈ ਪਰ ਲਹਿਰ ਨਹੀਂ ਹੈ। ਤਾਲਨ ਗਗਨ ਹਕਮ ਅਪਾਰਾ। ਨਾ ਹਉ ਤਵ ਅਪਾਰਾ। ਤਾਲਨ ਗਗਨ ਹੈ ਨਹੀਂ। ਹਕਮ ਵੀ ਹੈ ਨਹੀਂ। ਹਕਮ ਦੀ ਲੋੜ ਨਹੀਂ। ਹਕਮ ਜਦ ਪੈਦਾ ਹੋਇਆ ਜਦ ਅਸਲ ਜਿ ਹਕਮ ਕੀ ਹੈ। ਜਦ ਇੱਛਾ ਪੈਦਾ ਹੋਈ ਉਹਦੇ ਅੰਦਰ ਸ੍ਰਿਸ਼ਟੀ ਪੈਦਾ ਕਰਨ ਦੀ ਜੋਤ ਦੇ ਅੰਦਰ ਇੱਛਾ ਪੈਦਾ ਹੋਈ ਸ੍ਰਿਸ਼ਟੀ ਪੈਦਾ ਕਰਨ ਦੀ। ਉਹ ਇੱਛਾ ਦਾ ਲੋਇ ਹੁਕਮ ਪਾਣਾ ਕਹਿੰਦੇ ਇਹਨਾਂ ਨੂੰ ਹੂੰ ਹੂੰ ਹਾਂ ਪਾਣਾ ਇੱਛਾ ਹੀ ਹੁੰਦੀ ਹੈ ਪਾਣਾ ਇੱਛਾ ਹੀ ਹੁੰਦੀ ਹੈ ਜੋ ਘਾਦ ਕੇ ਹਾਂ ਔਰ ਜਿਹੜੀ ਇੱਕ ਯੂਨਿਟੀ ਦੀ ਇੱਛਾ ਯੂਨਿਟੀ ਦੀ ਇਹ ਤਾਂ ਹੈ ਸੰਗਤੀ ਦੀ ਇੱਛਾ ਪਾਣਾ ਸੰਗਤੀ ਦੀ ਇੱਛਾ ਸਰਬ ਦੀ ਇੱਛਾ ਹੈ ਸਰਬ ਸੰਤੀ ਹੈ ਪੜੋ ਦੀ ਸਰਬ ਸੁਭਤੀ ਹੈ ਇਹ ਪੜੋ ਸਾਰਿਆਂ ਦਾ ਸਾਰਿਆਂ ਦੀ ਇੱਛਾ ਹੈ ਪਰ ਸਾਡੇ ਕੱਲਿਆਂ ਦੀ ਜਿਹੜੀ ਇੱਛਾ ਹੁੰਦੀ ਹੈ ਨਾ ਬਾਣੇ ਤੋਂ ਵਿਰੋਧ ਉਹਦੀ ਕੀ ਸ਼ਕਤੀ ਹੈ ਉਹ ਪਾਪ ਹੈ ਇੱਛਾ ਕਰਨ ਦੀ ਗਿਆਨ ਤਾਂ ਕਰਕੇ ਅਸੀਂ ਇਹ ਕਰਦੇ ਆ ਜੇ ਤਾਂ ਭਾਣੇ ਦੇ ਅਨੁਸਾਰ ਹੈ ਤਾਂ ਤਾਂ ਪਾਪ ਹੈ ਨਹੀਂ ਇਹ ਵੈਲਿਓ ਕੋਈ ਨਹੀਂ ਇੱਛਾ ਪਾਪ ਜਿਹੜੀ ਪਾਪ ਦੇ ਅਨੁਸਾਰ ਉੱਠਦੀ ਹੈ ਜੀ ਫਿਰ ਉਹ ਉਹਦਾ ਕੰਮ ਹੋ ਜਾਂਦਾ ਮੈਂ ਹੋ ਤਾਂ ਜਾਂਦਾ ਉਹਦੇ ਇਹਦਾ ਐਫਰ ਉਹ ਆਪਣੇ ਆਪ ਉੱਠਦੀ ਹੋਈ ਇੱਕ ਵਿਰੋਧੀ ਉੱਠਦੀ ਇਹ ਕਾਫੀ ਡਿਵੈਲਪਮੈਂਟ ਹੋ ਗਿਆ 81 ਲੱਖ ਜੂਨ ਤੇ ਬਾਅਦ ਇਹਦੀ ਬੁੱਧੀ ਫਿਕਸਤ ਹੋ ਗਈ ਕਿਵੇਂ ਕੋਈ ਨਿਆਣਾ ਵੰਟੇ ਖੇਲਦਾ ਉਹੇ ਭਾਰੀ ਜਾਂਦੇ ਮਾਰੀ ਜਾਂਦਾ ਕੋਈ ਵੀ ਠੀਕ ਲੱਗ ਜਾਂਦਾ ਲੱਗਿਆ ਕਦੇ ਉਹਨੇ ਵਾਇਰ ਲੱਗ ਗਿਆ ਜੇ ਉਹਨੇ ਵਾਇਰਾਂ ਦਾ ਸਾਰੇ ਕਿਉਂ ਨਹੀਂ ਲੱਗੇ ਇਹ ਤਾਂ ਉਹ ਤਾਂ ਲੱਗਿਆ ਗਿਆ ਦੇਖੋ ਇਹ ਹੁੰਦਾ ਤੁਸੀਂ ਸਟਾਲਾਉਦੇ ਲੋਕ ਲਾਉਦੇ ਨਿਕਲਿਆ ਇਹਨੂੰ ਕੁਦਰਤੀ ਕਹੋ ਸੋ ਬਾਰ ਹੋ ਲਗਿਆ ਨਹੀਂ ਇੱਕ ਵਾਰ ਲਗਿਆ ਤੁਸੀਂ ਇਹਨਾਂ ਵੱਲੋਂ ਮੇਰੇ ਗਾਇ ਮੇਰੇ ਲਗਿਆ ਅੰਦਾਜ਼ਾ ਠੀਕ ਹੋ ਗਿਆ ਉਹ ਬੰਦੇ ਸ਼ਾਇਦ ਲਗਾਤਾਰ ਕਰਨ ਤੇ ਲੱਗਿਆ ਹੋਇਆ ਕੋਈ ਬਹੁਤੀਆਂ ਜਾਂਦੀਆਂ ਨੇ ਕੋਈ ਕਦੀ ਆ ਗਿਆ ਇਹਨੂੰ ਭਲੇਖਾ ਬਣਾਤਾ ਵੀ ਮੇਰੇ ਘਰ ਤੇ ਹੋ ਗਿਆ ਕੁਝ ਕਰਦਾਨ ਕਰਾਉਣੇ ਇਹਨਾਂ ਨੇ ਕਰਦੇ ਇਹੀ ਨੇ ਹੋਰ ਤਾਂ ਕੋਈ ਕਰਦਾ ਨਹੀਂ ਉਹ ਵੀ ਇਹਨੂੰ ਭਲੇਖਾ ਬਣਾਉਂਦੇ ਨੇ ਬੋਧਾ ਕਰਕੇ ਉਹ ਇਹ ਤੇ ਪ੍ਰੇਰਕੇ ਕਰਉਂਦਾ ਕਿਤੇ ਕਦੇ ਇਹ ਵਿਰੋਧੀ ਇੱਛਾ ਹੁੰਦੀ ਹੈ ਨਹੀਂ ਜਿਹੜੀ ਵਿਰੋਧੀ ਇੱਛਾ ਦੀ ਉਹ ਪ੍ਰੇਰੀ ਹੋਈ ਨਹੀਂ ਹੁੰਦੀ ਕਿਹੜੀ ਖੜੀ ਹੋਗੀ ਜਾਂਦਾ ਇਹ ਉਹ ਇੱਛਾ ਬੰਦੀ ਹੋਏ ਬੰਦ ਨੇ ਬਾਣੀ ਭਾਣੀ ਨਾ ਕਰ ਕੇ ਤੁਸੀਂ ਇੱਛਾ ਕਰੋ ਨਹੀਂ ਇੱਛਾ ਰੋਕਣ ਦਾ ਮਤਲਬ ਇਹ ਹੋ ਗਿਆ ਐਫਰਟ ਮੰਨ ਕੇ ਇਹ ਤਾਂ ਰੋਕਣੀ ਚਾਹੁੰਦਾ ਵੀ ਹੈ ਹੁਣ ਸਮਝਦੀ ਹੈ ਦਾ ਬਦਲ ਬਣ ਰਿਹਾ ਹੈ ਕੋਈ ਨਹੀਂ ਕਿਸੇ ਪਾਸੇ ਲਾਓ ਮਨ ਨੂੰ ਅਸਲ ਚਾਹੀ ਮਨ ਦੂਏ ਪਾਸੇ ਲਾਇਆ ਨਹੀਂ ਹੋਇਆ ਇੱਛਾ ਤਾਂ ਉੱਠਦੀ ਹੈ ਚੌਥੀ ਹੋਊਗੀ ਨਿਆਣਾ ਨੂੰ कम ਲਾ ਦੋ पढ़ ਪੜ੍ਹ ਲਾ ਦੋ ਸ਼ਰਤ ਕਿਉਂ ਕਰੂਗਾ अपना ਹੋਰ ਉਹਦੇ ਕੰਮ ਤੋਂ ਉਹ ਉਹ ਆਪਣਾ ਕੰਮ ਨਹੀਂ ਕਰ ਰਿਹਾ ਤਾਂ ਉਹਨੇ ਕੁਸਤਾ ਕਰਨਾ ਹੀ ਹੋਵੇ ਅਸਲ ਤੇ ਜਿਹੜਾ ਕੰਮ ਸੀ ਆਇਆ ਇਹ ਉਹ ਕੱਬ ਤੋਂ ਅਸੀਂ ਵਿਹਲਾ ਛੜਿਆ ਹੋਇਆ है। ਵਿਹਲਾ ਰਹੂ ਤਾਂ ਸਰੀਰ ਦਾ ਕੰਮ ਕਰਨਾ ਬਿਲਕੁਲ ਬਿਲਕੁਲ ਬਸ ਇਹ ਸੰਸਾਰ ਦੇ ਬਣਿਆ ਵੀ ਸਰੀਰ ਨੂੰ ਕੰਮ ਲੱਗਿਆ ਹੈ ਜਿਹੜਾ ਸਰੀਰ ਹੈ ਇੱਥੇ ਯਾਰ ਬੱਚਾ ਪੜ੍ਹਦਾ ਹੋਰ ਗੱਲ ਹੈ ਪੂਰੀ ਗੁੱਤੀ ਕੰਮ ਕਰਦੀ ਸਰੀਰ ਦਾ ਕੰਮ ਕਰ ਰਿਹਾ ਹੋਰ ਗੱਲ ਹੈ ਇੱਕ ਬਜ਼ੁਰਗ ਸਰੀਰ ਦਾ ਕੰਮ ਕਰ ਰਿਹਾ ਦਿਮਾਗ ਵੇਲਾਉਦਾ ਸੋਚੂਗਾ ਪੜਨ ਵੇਲੇ ਬੁੱਧੀ ਦਾ ਕੰਮ ਹੈ ਪੜ੍ਹਨਾ ਪੜਨਾ ਸਭ ਨੂੰ ਦਾ ਅਕਲ ਦਾ ਕਰਨ ਇਹ ਤਾਂ ਮਤਲ ਅਕਲੇ ਇੱਛਾ ਕਰਦੀ ਹੈ ਅਕਲ ਜੋ ਇੱਛਾ पैदा ਹੁੰਦੀ ਉਹ ਵੀ ਕਿੱਥੋਂ ਪੈਦਾ ਹੁੰਦੀ ਹੈ ਆਤਮਾ ਨੂੰ ਕੰਮ ਲਾ ਕੇ ਰੱਖਣਾ ਸਰੀਰ ਚਾਹੇ ਵਿਲਾ ਰਹੇ ਜੇ ਘਰ ਮਤ ਦੂਈ ਗੁਰਬਾਣੀ ਵਿਚਾਰ ਕਰਦੇ ਹੋ ਪੈ ਕੇ ਮੰਜੇ ਤੇ ਕੀ ਕਰਦੇ ਹੋ ਕੁਝ ਨਹੀਂ ਕਰਦੇ ਸਰੀਰ ਦੇ ਇਨਵੋਲਵਮੈਂਟ ਦਾ ਕੋਈ ਮਤਲਬ ਨਹੀਂ ਹੈ ਇਹਦੇ ਨਾਲ ਇਹ ਇੱਥੇ ਵੱਡਾ ਭਲੇਖਾ ਇੱਥੇ ਹੈ ਕਿ ਸਰੀਰ ਦੇ ਕੰਮ ਲੱਗਣ ਨੂੰ ਅਸੀਂ ਕੰਮ ਨਹੀਂ ਸੰਸਾਰ ਦੇ ਲੋਕਾਂ ਨੇ ਇਹ ਤਾਂ ਕੰਮ ਨਹੀਂ ਵੰਤਾ ਵੇਲਾ ਚਲਾਉਂਦਾ ਕਾਰ ਪਤਾ ਨਹੀਂ ਕਿੱਥੇ ਤੁਰਿਆ ਫਿਰਦਾ ਮਜ਼ਦੂਰ ਢੋਲਣਾ ਆਉਂ ਉਹ ਪਤਾ ਨਹੀਂ ਕਿੱਥੇ ਤੁਰਿਆ ਫਿਰਦਾ ਮਨ ਵੇਲਾ ਉਸ ਵੇਲੇ ਬਿਲਕੁਲ ਵੇਲਾ ਹੱਥ ਪੈਰ ਕਰ ਕੰਮ ਸੌਫਾ ਚੀਤ ਲੰਝਣ ਇਹੋ ਵੇਲੇ ਚੀਤ ਵੇਲਾ ਤੇਰਾ ਜਦੋਂ ਹੱਥ ਪੈਰ ਕੰਮ ਲੱਗੇ ਨੇ ਵੇਲਾ ਸਾਰਾ ਤੇ ਅਕਲ ਵੀ ਬੇਲੀ ਹੈ ਕਿਸੇ ਵੇਲੇ ਹੁੰਦਾ ਹੈ ਕੋਈ ਉਹਨੂੰ ਲੋਡ ਪੈਂਦੀ ਹੈ ਸੋਚਣ ਦੀ ਜਾਂ ਦੇਖਦਾ ਵੀ ਆਹ ਕੰਮ ਖਰਾਬ ਹੋ ਜੂਏ ਕਿਵੇਂ ਕਰਾਂ ਐਵੇਂ 2-4 ਮਿੰਟ ਵਾਸਤੇ ਨਹੀਂ ਜੇ ਜਦੋਂ ਅਖਬਾਰ ਪੜਦਾ ਕੰਮ ਲੱਗਿਆ ਮੰਨਾਂਗੇ ਅਖਬਾਰ ਪੂਰੀ ਕਨਸੈਂਟ੍ਰੇਸ਼ਨ ਇਹ ਕੰਮ ਕਲਪਨਾ ਨਹੀਂ ਕਰਦਾ ਸਰੀਰ ਵੀ ਬੜਾ ਕਰਦਾ ਲਈ ਕੀ ਕਹਤਾ ਦਾ ਸਰੀਰ ਤੇ ਅਕਲ ਨਾਲੇ ਕੰਮ ਕਰਦਾ ਪਰ ਇੰਨੀ ਕਾ ਅਕਲ ਨਾਲ ਕੰਮ ਕਰਦਾ ਹੈ ਸਰੀਰ ਕਿ ਜਿੰਨੀ ਕਲਾਂ ਹੈ ਇਹਨਾਂ ਡਿਗੇ ਦਾ ਕੰਟਰੋਲ ਕਰ ਲੋ ਇੰਨੀ ਕਰੋ ਜਿਵੇਂ ਸੁਪਨੇ ਦੇ ਵਿੱਚ ਸਰੀਰ ਕੰਮ ਕਰਦਾ ਹੁੰਦਾ ਕਹਤਾ ਦਾ ਹਾਂਜੀ ਦਸ ਇਹ ਸੁਪਨੇ ਜੇ ਕੰਮ ਕਰਦਾ ਸਤਾ ਵੀ ਪਿਆ ਕੰਮ ਵੀ ਕਰਦਾ ਬਹੁਤ ਘੱਟ ਕੰਮ ਕਰਨ ਵਾਲੇ ਦੀ ਅਕਲ ਦਾ ਯੂਜ਼ ਹੈ ਕੋਈ ਕੋਈ ਐਸੇ ਕੰਮ ਹੁੰਦੇ ਨੇ ਜਿੱਥੇ ਬਹੁਤ ਧਿਆਨ ਨਾਲ ਕੰਮ ਕਰਨਾ ਪੈਂਦਾ ਇੱਥੇ ਬਹੁਤ ਆ ਆਪੇ ਬੰਦ ਹੋ ਜਾਣੀ ਇਹ ਤਾਂ ਫਿਰ ਆ ਕੀਤੀ ਹੋਈ ਨਹੀਂ ਹੁੰਦੀ ਹਾਂ ਨਾ ਨਾ ਨਾ ਕੀਤੀ ਹੋਈ ਕਲਪਨਾ ਮਾਰਦੇ ਹੋਣਗੇ ਉਹ ਸਾਈਕਲ ਚਲਾ ਰਿਹਾ ਉਸ ਵੇਲੇ ਬਿਲਾ ਬਿਲਾ ਉਹ ਵੇਲੇ ਬਹੁਤ ਧਿਆਨ ਨਾਲ ਕੋਈ ਫਿਰ ਉਦੋਂ ਬਿਲਾ ਹੈ ਤੁਸੀਂ ਕਰ ਨਹੀਂ ਸਕਦੇ जब ਕਲਪਨਾ ਕਰਨੀ ਹੈ ਉਦੋਂ ਅਲਰਟ ਹੋ ਕੇ ਨੂੰ ਜਦ ਗੁਰਬਣ ਵਿਚਾਰ ਕਰੋ ਤੇ ਅੰਤੈਸ ਗਲਦਾਰ ਖੜੇ ਨਾ ਵਿਵਹਿਲਾ ਨਹੀਂ ਹੈ ਜਬੇਲਾ ਹੋਣੇ ਜਦੇ ਔੜਾਰੀ ਮਾਰ ਜਾਨੀ ਉਦੋਂ ਡੋਪ ਪੈਣ ਜਿਹੜੇ ਆਦਮੀ ਨੇ ਨਾ ਸਭੇ ਡੋਪ ਪੈਣ ਲੱਗ ਜਾਂਦੇ ਅੰਦਰ ਜਦੋਂ ਡੋਨ ਨਾਲ ਦਾ ਡੋਪ ਪੈਂਦਾ ਪਰ ਪਤਾ ਹੂੰ ਜੇ ਨੂੰ ਟੱਕੜਦੀ ਹੱਥ ਪੈ ਗਿਆ ਹੋਇਆ ਹੈ ਉਹਨੂੰ ਕੀ ਪਤਾ ਲੱਗਦਾ ਉਹਦੀ ਕੰਮ ਸੋ 4 ਡਿਗਰੀ ਬੁਖਾਰ ਰਹਿੰਦਾ ਉਹਨੂੰ ਸੋ ਤੱਕ ਲੀਫ ਮਿਲਦੀ ਹੈ ਅਸਲ ਜਿਹੜੇ ਵੈਗਰਵੇਦ ਨੂੰ ਬਹੁਤ ਲੀਫ ਉਹਦੇ ਵਿੱਚ ਤੇ 107 ਨੂੰ ਐਸੋ ਹੁੰਦਾ ਵੀ ਅਸੀਂ ਸੋਕੇ ਇਕਦਾਂ 107 ਤਾਂ ਹੈਗਾ ਜੇ ਵੀ ਇਕੜੀਂ ਦੀ ਥੱਲੇ ਆ ਗਏ ਇਕੜੀਂ ਗਰੀ ਉਹਨਾਂ ਨੂੰ ਪਤਾ ਲੱਗਦਾ ਕਿ ਅਸੀਂ ਰੀਫਰਸਰ ਇਹ ਇਹਨਾਂ ਦੀ ਗੱਲ ਪੂਰਬ ਮਰਦਾਨੀ ਕਰ ਰਹੇ ਨੇ ਇਹ ਸੇਨਾਂ ਦੀ ਗੱਲ ਕਰ ਆਨੰਦ ਅਨੰਦ ਸੋਹਣ ਫਿਰ ਉਹ ਸਭ ਕੋਲ ਦੇ ਵਿਚਾਲੇ ਰਹੇ ਇਹ ਇਹ ਨੂੰ ਜਰੂਰ ਦੰਦਾਂ ਕਹੇ ਨਹੀਂ ਹੁੰਦੇ ਨੇ ਇਹੋ ਇਕ 20 ਡਿਗਰੀ ਡੇੜਾ ਤਾਂ ਪਰ 17 ਡਿਗਰੀ ਤੇ ਥਲੇ ਰੋ ਉਪਰਾ ਲੀਫਟਰ ਮਿਲਣੀ ਉਹ ਆਪਣੇ ਵਾਸਤੇ ਦੀ ਗੱਲ ਕਰ ਰਿਹਾ ਆਨੰਦ ਕੀ ਹੈ ਤਾਂ ਉਹ ਨੂੰ ਨਹੀਂ ਪਤਾ ਉਹਦੇ ਵਾਸਤੇ ਆਨੰਦ ਹੋਈ ਹੈ ਪਰ ਕਹਿੰਦੇ ਆਨੰਦ ਗੁਰੂ ਤੇ ਜਾਣੇ ਹੁਣ ਪਤਾ ਲੱਗਿਆ ਆਨੰਦ ਕੀ ਹੁੰਦਾ ਯਾਰ ਨਾਰਮਲ ਟੈਂਪਰੇਚਰ ਹੋ ਗਿਆ ਫੇਰ ਪਤਾ ਲੱਗਿਆ ਆਨੰਦ ਕੀ ਹੁੰਦਾ ਥਲੇ ਆ ਗਿਆ ਬਿਲਕੁਲ ਪਾਰਾ ਜਿੱਥੇ ਹੋਣਾ ਚਾਹੀਦਾ ਸੀ ਫੇਰ ਪਤਾ ਲੱਗਿਆ ਕਿ ਇੱਥੇ ਆਨੰਦ ਤਾਂ ਜਦ ਵੰਡ ਟਿਕ ਗਿਆ ਬਿਲਕੁਲ ਟਿਕਦਾ ਮੈਨੋਂ ਜ਼ਿਆਦਾ ਜੋ ਚੀਜ਼ ਮਿਲਣੀ ਹੁੰਦੀ ਹੈ ਜੋ ਘਾਟਾ ਹੁੰਦਾ ਪੂਰਾ ਹੋ ਜਾਏ ਇਹਨਾਂ ਘਾਟਾ ਪਿਆ ਹੋਇਆ ਹੈ ਰੋ ਇਹ ਪੂਰਾ ਹੋ ਜਾਏ ਫਿਰ ਵੀ ਵੰਡ ਟਿਕ ਜਾਂਦਾ ਜੂਆ ਖੇਡਦਾ ਘਾਟਾ ਪੈ ਗਿਆ ਤੇ ਜਦੋਂ ਘਾਟਾ ਪੂਰਾਤਾ ਜਾਏ ਬਿਆਪਕਤਾ ਬਣੀ ਰਹਿੰਦੀ ਹੈ ਜਹਾਰਿਆਂ ਦੇ ਹੰਦ ਜਦ ਬਰਾਬਰ ਆ ਜਾਂਦਾ ਹੈ ਕੰਮ ਉਸ ਵੇਲੇ ਸ਼ਾਂਤੀ ਆ ਜਾਂਦੀ ਹੈ ਹੁਣ ਬਰਾਬਰ ਹੋ ਬੈਜ ਗੇੜਦੇ ਨੂੰ ਬਰਾਬਰ ਹੋ ਜਾਣ ਨੂੰ ਸ਼ਾਂਤੀ ਹੋ ਜਾਂਦੀ ਹੈ ਅਨੁਭਵ ਉਜੋਸ ਕਰਦਾ ਹੋਰ ਪਰਮਾਤਮਾ ਦੀ ਅਰੰਧ ਗਿਆਨਤਾ ਤੋਂ ਬਰਾਬਰ ਹਾਂ ਜੀ ਰਾਮ ਰਾਮ ਕਰਤਾ ਸਭ ਜੱਗ ਫਿਰੇ ਰਾਮ ਪਾਇਆ ਜਾਏ ਲੋਕ ਨੇ ਆਨੰਦ ਆਨੰਦ ਕਰ ਉਹਨਾਂ ਦੀਆਂ ਮਨਮੁਤਾਂ ਸਾਰੀਆਂ ਮਨਮੁਤਾਂ ਨੇ ਆਨੰਦਾਰੂਣ ਕਹਿੰਦੇ ਨੇ ਆਨੰਦੋ ਵੀ ਕਹਿੰਦੇ ਨੇ ਇਹ ਮਨਮੁਤਾਂ ਉਹਨਾਂ ਦਾ ਨਾਮ ਵੀ ਵੱਖਰਾ ਹੈ ਉਹਨਾਂ ਦਾ ਤਾਪ ਵੀ ਵੱਖਰਾ ਹੈ ਉਹਨਾਂ ਦਾ ਜਪ ਵੀ ਵੱਖਰਾ ਹੈ ਸਾਰੇ ਦੇ ਆਪਣੇ ਆਪਣੇ ਜਪ ਨੇ ਆਪਣੇ ਆਪਣੇ ਤਾਪ ਨੇ ਜੇ ਆਪਣੇ ਆਪਣੇ ਤਾਪ ਨੇ ਤਾਂ ਗੁਰੂਆਂ ਦੇ ਜੀ ਇਹਦੇ ਅਸਾਂ ਜਪ ਅਸਾਂ ਜਪ ਕਿੱਥੋਂ ਹੋਗੇ ਬਈ ਜਪਦੇ ਪੱਪੇ ਨੂੰ ਉਣਕੜ ਲੱਗਿਆ ਹੈ ਲੱਗਿਆ ਜਪ ਆਦ ਸੱਚ ਲੇਗਰ ਪਰ ਜabb ਤੱਕ ਕੋਈ ਔਕੜ ਦਾ ਮਤਲਬ ਹੈ ਜabb ਕੇਵਲ ਅਸਲੀ ਕਹ ਬਾਕੀ ਸਭ ਨਕਲੀ ਨੇ ਅਸੰਖਜਾਪ ਦਾ ਮਤਲਬ ਹੈ ਦੁਨੀਆਂ ਦੇ ਆਪਣੇ ਆਪਣੇ ਜੱਤ ਬਣਾ ਲਏ ਐਨੀਆਂ ਮਤਾਲੇ ਮੈਂ ਗਿਰਦੀ ਨਹੀਂ ਕਰ ਸਕਦਾ ਲਿਖਿਆ ਸਾਰੇ ਹਿੰਦੁਸਤਾਨ ਦੇ ਚੱਕਰ ਕੱਟ ਕੇ ਇਹ ਗੱਲ ਕਬੀਰ ਨੇ ਨਹੀਂ ਲਿਖੀ ਕਿਉਂ ਚੱਕਰ ਕਟਿਆ ਨਹੀਂ ਸਾਰੇ ਦੇਸ਼ ਦੇਖ ਰਹੇ ਹਾਂ ਕੋਹ ਨੂੰ ਦੇਖੇ ਕੇ ਆ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕੋਈ ਹੁੰ ਦੇਖੇ ਪ੍ਰਾਣਪਤੀ ਦਸ ਬਚ ਗਏ ਨੇ ਕਟਨੇ ਉਹ ਸਾਰੇ ਗਏ ਨੇ ਸਾਰੇ ਉਹਨਾਂ ਕੋਲ ਦੇ ਗਏ ਪ੍ਰਾਣਪਤੀ ਦੀ ਮੱਤ ਕਦੇ ਹੈ ਨਹੀਂ ਪ੍ਰਾਣਪਤੀ ਦੀ ਮੱਤ ਕੀ ਹੁੰਦੀ ਹੈ ਪ੍ਰਾਣਪਤੀ ਅੰਤਰਾਤਮਾ ਨੂੰ ਕਿਹਾਵੇ ਅਸੀਂ ਪਰਮਾਤਮਾ ਨੂੰ ਕਹਿੰਦੇ ਕੋਈ ਪ੍ਰਾਣਪਤੀ ਪ੍ਰਾਣਪਤੀ ਦਾ ਅਰਥ ਰਵਾਤ ਕੋ ਹੁੰਦਾ ਅੰਤਰਾਤਮਾ ਨਿਕਲਦਾ ਪਰਾਤਮਾ ਲੱਭਦਾ ਪਰਮਾਤਮਾ ਲੱਭ ਨਹੀਂ ਹੈ ਸਾਡੇ ਪ੍ਰਾਣਾ ਦਾ ਸੰਬੰਧ ਹੈ ਸਾਡੀ ਅੰਤਰਾਤਮਾ ਨਾਲ ਸਾਡੇ ਪ੍ਰਾਣਾ ਦਾ ਬਦੀ ਉਹ ਆ ਉਹ ਸਾ ਲੈ ਰਿਆ ਤਾ ਸਾ ਹੁੰਦਾ ਸਾ ਲੈਂਦੀ ਸਭ ਸੁਭਾਣਾ ਲੋਹਾ ਤੂ ਤੂੰ ਦੇਖ ਮਹੰਡਾ ਸੌ ਸਾਈ ਜੋ ਹੈ ਮੁਖਾ ਮੁਖਾ ਆਨਕੋ ਬੈਠਾ ਪੱਖੇ ਬੋ ਲੰਮੇ ਸੇਵੇ ਦਰ ਖੜਾ ਜਦੋਂ ਦਾ ਦਰਸ਼ਨ ਹੋਇਆ ਅੰਦਰ ਤਾਂ ਕਹਾਂ ਮਨ ਕਹਿ ਰਿਹਾ ਬੁੱਧੀ ਨੂੰ ਮਨ ਮੂਰੇ ਗੱਲ ਹੈ ਬੁੱਧੀ ਨੇ ਆ ਪਿੱਛੇ ਿਆਣਾ ਵੀ ਜਬੂਲੇ ਰੱਖੀਦਾ ਪਿੱਛੇ ਰੱਖਾਂਗੇ ਕੀ ਬੰਦਾ ਪਿੱਛੇ ਕੀ ਕਰਦਾ ਹੋ ਅੱਖਰੇ ਸਾਹਮਣੇ ਰੱਖੀ ਜਾਂਦੇ ਤਾਂ ਕਹਿੰਦੇ ਉਹ ਤਾਂ ਪੱਜੂ ਫੜ ਲਾਂਗੇ ਆ ਮੋਰੇ ਗਏ ਬਜ਼ਾਰ ਜਾਣਾ ਪਿੱਛੇ ਖਬਰਾਂ ਕੀਦੇ ਥੱਲੇ ਆ ਜਿਓ ਜਰਾ ਵੀ ਚ ਰਖਣਾ ਬੂਹੇ ਬਾਰਾ ਨਾ ਮਹਾਂ ਕਿ ਚੁਤੀਆਂ ਲੈਦਾ ਮਾਇਆ ਤੋਂ ਮਾਇਆ ਸ਼ੁਰੂ ਹੋਇਆ ਬੁੱਧੀ ਨੇ ਮਨ ਮੂਰੇ ਗਲੇ ਤੁੰਗਲ ਮੂਰੇ ਬਾਇੂ ਹੋਇ ਪਹਿਲਾਂ ਮੂਰੇ ਬੰਦੇ ਨੇ ਦੇਖਣ ਜੋ ਕੋ ਦੇਖਣਾ ਉਹ ਗਿਆ ਉਹੀ ਦੇਖੋ ਮਰਦਾ ਭੱਜ ਕੇ ਓਰੇ ਰਹਿਦਾ ਵਿਚਾਰਾ ਨ ਭੱਜ ਕੇ ਓਰੇ ਹੀ ਆ ਫੇ ਨਿਆਣਾ ਇਹਦਾ ਪ੍ਰੀਏ ਆ ਜਿਹੜਾ ਮੂਰੇ ਖੜਾ ਹੈ ਮੈਨੂੰ ਤਾਂ ਇਹ ਲੱਗਦਾ ਵੀ ਜਿਹਨੂੰ ਤੂੰ ਕਹਿੰਦੀ ਪ੍ਰਾਨਪਤੀ ਉਹੀ ਹੈ ਇਹ ਇਹੋ ਆਪਾਂ ਕਹਿੰਦੇ ਤੇ ਹਵਾਲਾ ਸਾਬ ਹੈ ਸਾਬ ਕਹਿੰਦੀ ਸੀ ਤੂੰ ਆ ਜਿਹੜਾ ਮੇਰੇ ਕੋਲ ਹੋਰ ਇੱਥੇ ਤਾਂ ਕੋਈ ਹੈ ਹੀ ਨਹੀਂ ਤੂੰ ਕਹਿੰਦੀ मैं ਬਾਹਰ ਟੋੜਦਾ ਸੀ ਜਿਹੜਾ ਜਦ ਭਰਮਿਸ਼ ਸੀ ਆਪਾਂ ਬਾਹਰ ਦੋਏ ਟੋੜਦੇ ਸੀ ਆ ਤਾਂ ਮਣ ਗਿਆ ਮੈਨੂੰ ਲੱਗਦਾ है, ਉਹੀ ਹੈ ਤੂੰ ਜਾਣ ਅੰਜਾ ਸੋ ਮੰਜਾ ਸੋ ਸੰਜੋਏ ਬੂਹੇ ਖੜਾ ਇਹਨਾਂ ਆਪਣੇ ਮੂਰੇ ਖੜਾ ਕੀ ਕਰਦਾ ਹੈ ਨਾਨਕ ਬੈਠਾ ਪੱਖੇ ਸਾਲਾ ਰੇ ਕਿਤੇ ਰਿਆ ਸਾਹ ਛੱਡ ਰਿਹਾ ਉਹ ਭੱਖ ਰਿਹਾ ਸਾਹ ਲੰਮੇ ਜੇ ਬੈਠੜਾ ਗੜਾ ਇਹ ਤਾਂ ਜਿੱਦਾਂ ਹੀ ਕਰਦਾ ਜਾਂਦੇ ਆਪਾਂ ਜੰਮੇ ਸਰੀਰ ਠੰਡ ਕੀਤਾ ਆਪਾਂ ਨੂੰ ਤਾਂ ਪਤਾ ਹੀ ਨਹੀਂ ਸੁਣਦੇ ਦੀ ਵੀ ਉਹਦਾ ਉਹਦੀ وجہ ਨਾਲ ਸਾਹ ਆਉਂਦਾ ਬਾਹਰ ਵੀ ਇਹੀ ਕਹਿੰਦੇ ਨੇ ਜਿਹਦੀ وجہ ਨਾਲ ਸਾਡਾ ਸਾਹ ਆਉਂਦਾ ਉਹ ਸੋਹ ਹੈ ਉਹ ਆ ਸਾਹ ਹੈ ਲੈ ਰਿਹਾ ਬਾਹਰ ਦੇ ਲੈ ਰਿਹਾ ਦਾ ਫੰਦ ਰੁਆ ਰਿਹਾ ਕੋਲੇ ਬਾਹਰ ਫਿਰਦੇ ਆ ਬਲੈਕ ਬੈਲ ਨਹੀਂ ਤਾਂ ਹੋਰ ਦੱਸੋ ਕੀ ਹੈ ਕਿਹੜਾ ਨਿੰਮਨਦਾਇ ਇਸ ਗੱਲ ਨੂੰ ਵੀ ਸਾਹ ਉਹਦੀ ਜੋ ਮੰਗ ਰਹੇਂ ਦਰੇ ਮੰਗਣਾ ਦਾਨ ਵੀ ਹੋਈ ਪ੍ਰਾਣ ਕੇ ਬਚਾਈਆ ਸਾਰੇ ਕਹਿੰਦੇ ਨੇ ਉਹਦੀ ਵਜ੍ਹਾ ਨਾਲ ਸੌ ਹੁੰਦਾ ਸਾਂਦਰੋਂ ਆਉਂਦਾ ਕਿ ਬਾਹਰੋਂ ਆਉਂਦਾ ਬਾਹਰੋਂ ਤਾਂ ਛੱਡ ਦੇਦਾ ਸਾਂ ਅੰਦਰੋਂ ਖਿੱਚਦਾ ਬਾਹਰ ਨੂੰ ਛੱਡ ਦਿੰਦਾ ਖਿੱਚਣ ਵਾਲਾ ਅੰਦਰ ਬੈਠਿਆ ਵੇ ਪੱਖਣ ਵਾਲਾ ਨਾਲਕ ਬੈਠਾ ਖਿੱਚਣ ਕੀ ਬਲੈਕਮੇਲ ਹੀਨੀ ਇਹ ਇਹ ਬੁੱਧੀ ਹੈ ਨਹੀਂ ਪੜ ਲਿਆ ਇਹ ਆ ਬੁੱਧੀਹੀਨ ਨੇ ਜਾਂ ਬਲੈਕਮੇਲਰ ਨੇ ਦੋਹਾਂ ਚੋਂ ਇੱਕ ਗੱਲ ਜ਼ਰੂਰ ਹੈ ਹੁਣ ਬੁੱਧੀਹੀਨ ਨੇ ਜਾਂ ਬਲੈਕਮੇਲਰ ਨੇ ਇਹ ਉਹਨਾਂ ਦੀ ਸਬਰ ਕਰਕੇ ਪਤਾ ਲੱਗਦੀ ਜਦੋਂ ਪਤਾ ਲੱਗ ਜਾਂਦਾ ਹੈ ਫਿਰ ਬੁੱਧੀਹੀਨ ਵੀ ਬਲੈਕਮੇਲਰ ਬਣ ਜਾਂਦੇ ਨੇ ਪਹਿਲਾਂ ਬੁੱਧੀਹੀਨ ਹੁੰਦੇ ਨੇ ਫਿਰ ਕੋਈ ਬੁੱਧੀਹੀਨ ਬੁੱਧੀਮਾਨ ਹੁੰਦਾ ਜਿਹੜਾ ਮੰਨ ਲੈਂਦਾ ਹੈ ਸਭ ਕੁਝ ਉਹਨੂੰ ਕਹਿੰਦੇ ਨੇ ਹੈ ਮਿਰਲੇ ਨਹੀਂ ਆਮ ਤੌਰ ਤੇ ਬਲੈਕ ਮੈਨਰ ਦੇ ਬਣ ਜਾਂਦੇ ਨੇ ਬੁੱਧੀ ਵਾਲੇ ਕੜੇ ਬਲੈਕ ਮੈਨਰ ਦੇ ਕੜੇ ਬਲੈਕ ਮੈਨਰ ਨੇ ਕੋਈ ਫਿਰਦਾ ਬੁੱਧੀ ਮਾਨ ਬੁੱਧੀਵਾਨ ਬੁੱਧੀਵਾਨ ਜਿਹੜਾ ਅਕਲ ਮਿਲਦੀ ਹੋਵੇ ਲੈ ਲਵੇ ਜਿਹੜਾ ਅਕਲ ਦੀ ਕਦਰ ਕਰੇ ਉਹ ਬੁੱਧਵਾਨ ਹੈ ਜਿਹੜਾ ਮਾਇਆ ਦੀ ਕਦਰ ਕਰੇ ਬੁੱਧ ਹੈ ਮਾਇਆ ਤੋਂ ਕੋ ਰਹਿਣੀ ਨਹੀਂ ਅਕਲ ਕਦੇ ਤੋਂ ਨੂੰ ਜਾਣੀ ਨਹੀਂ ਜੇ ਅਕਲ ਲੈ ਨੂੰ ਕਦੇ ਜਾਣੀ ਨਹੀਂ ਤਿੰਨੇ ਲੋਕਾਂ ਜਣਾ ਲੋਕ ਤੇ ਚਲੀ ਜਾਵੇ ਕਈ ਵਾਰ ਹਾਂ ਕਈ ਵਾਰ ਇੱਥੇ ਵਾਰੇ ਚੀਕ ਨਹੀਂ ਕਰੋੜਪਤੀ ਬਣ ਜਾਂਦੇ ਕਿਉਂਕਿ ਪਤਾ ਲੱਗਦਾ ਇੱਥੇ ਮਾਇਆ ਦਾ ਕੋਈ ਭਰੋਸਾ ਨਹੀਂ ਕਿਹੜੇ ਵੇਲੇ ਚਲੀ ਜਾਣਾ ਅਕਲ ਕਿਤੇ ਨਹੀਂ ਕਰ ਸਕਦੀ ਪਰ ਅਕਲ ਕਿਹੜੀ ਹੋ ਬਵੇ ਗੁਰ ਦੀ ਗੁਰਬਾਣੀ ਗੁਰਬੋਧ ਤਾਗਾ ਗੁਰ ਕੀ ਮਤੂ ਲੈ ਇਹੜੇ ਇੱਥੇ ਆਲੀ ਅਕਲ ਦਾ ਖਤਮ ਹੋ ਮਾਇਆ ਦੀ ਮਾਇਆ ਦੇ ਰਾਹੇ ਚਲੀ ਜਾਂਦੀ ਆਪਰੇ ਆਪੇ ਮੰਗਣ ਦਾ ਲੱਗ ਜਾਂਦਾ ਜਿਵੇਂ ਅਸੀਂ ਲੈ ਆਣ ਭਗਤ ਬਣ ਬੋਲੂਪੇ ਸਣਾ ਇਹਹੀ ਭਗਤੀ ਹੈ ਗੁਰ ਕੀ ਲੈਣੀ ਭਗਤੀ ਹੈ ਹੋਰ ਕੋਈ ਭਗਤੀ ਨਹੀਂ ਉਹ ਭਗਤੀ ਹੋਣੀ ਪਰ ਇੱਥੇ ਹੋ ਕੀ ਰਿਹਾ ਹੈ ਇਹਦਾ ਰਾਮ ਰਾਮ ਹੋ ਰਿਹਾ ਜਿਹੜਾ ਇਹਦਾ ਸ਼ਬਦ ਹੈ ਜਿਹੜਾ ਹੈ ਰਾਮ ਰਾਮ ਨੂੰ ਭਗਤੀ ਮੰਨ ਲਿਆ ਜੇ ਰਾਮ ਰਾਮ ਕਰਨਾ ਸੀ ਕਰਨ ਦੇ ਵਿੱਚ ਕੋਈ ਹਰਜ ਨਹੀਂ ਸੀ ਪਰ ਉਹ ਰਾਮ ਸਵੇਰ ਟੱਕਰ ਰਾਮ ਬੋਲਦਾ ਅੰਦਰ ਬੋਲਦਾ ਦੱਸਿਆ ਨਾ ਸਭਾ ਦਾ ਡਰਾਮ ਬੋਲ ਲੈ ਤੂੰ ਰਾਮ ਰਾਮ ਕਰਨੀ ਕੀ ਰੋਣਾ ਰਾਮ ਤਾਂ ਬੁਲਾਉਂਦਾ ਚਲੇ ਜਾਓ ਰਾਮ ਨੇ ਕੋਲ ਚਲੇ ਜਾਓ ਤਾਂ ਅੰਦਰ ਹੈ ਉਹ ਅੰਦਰ ਹੈ ਬਾਹਰ ਹੈ ਉਹ ਘਰ ਬੈਠਾ ਹੈ ਬਾਹਰ ਬੈਠੇ ਪਰਦੇ ਤੋੜ ਪਰਦੇਚ ਆਪ ਹੈ ਤੋੜ ਦੋ ਉਹਨੂੰ ਪਰਦੇਚ ਜਿੱਥੇ ਆਪ ਉੱਥੇ ਲੱਗੂਗੀ ਲੋਕ ਜਿਹੜੇ ਦੂਏ ਦੱਸਣ ਵਾਲੇ ਬਾਹਰ ਬੰਨੀ ਬੈਠੇ ਨੇ ਵਿਦਵਾਨ ਬਾਹਰ ਬੰਨੀ ਬੈਠੇ ਨੇ ਜਿਹਨੂੰ ਪੁੱਛ ਰਿਹਾ ਵੀ ਕਿੱਧਰ ਇਹਨੂੰ ਪੁੱਛ ਲਿਆ ਉਹਨੇ ਬਾਹਰ ਬਣਾਇਆ ਉਹਨੇ ਕਿਹਾ ਵੀ ਇਹ ਅੰਦਰ ਵੱਲ ਚਲੇ ਗਏ ਅੰਦਰ ਜਾਣ ਵਾਲੇ ਸਾਰੇ ਬਰਾਬਰ ਹੋ ਜਾਂਦੇ ਨੇ ਉਹਨੂੰ ਟੈਕਸ ਕੌਣ ਦੇਊਗਾ ਉਹਨਾਂ ਦਾ ਕੰਮ ਤੁਹਾਨੂੰ ਦੇਊਗਾ ਉਹਨੂੰ ਵੀ ਜਦ ਗਿਆਨ ਹੋ ਗਿਆ ਉਹਨੂੰ ਤਾਂ ਉਹ ਫਿਰ ਉਹਨਾਂ ਦੀ ਸੰਸਥਾ ਕਿ ਥੰਗੂਰੂ ਉਹਨਾਂ ਦੀ ਕਿ ਕਿੱਥੇ ਚੱਲੂਗੀ ਇਹ ਤਾਂ ਬਰਾਬਰ ਨੇ ਅੰਦਰ ਜਾ ਰਹੇ ਸਾਰ। ਉਹ ਤਾਂ ਸਿਰ ਭਾਈ ਮੀਤ ਨੇ ਤਾਂ ਉਹਨਾਂ ਨੇ ਗੁਰੂ ਬਣਨੇ। ਉਹ ਭਾਈ ਮੀਤ ਨੇ। ਉਹ ਭਾਈ ਮੀਤ ਨੇ ਇਹ ਬਾਹਰ ਤਾਂ ਅੱਖਾਂ ਖੋਲ ਕੇ ਲੱਭਦਾ ਜੀ ਅੰਦਰ ਇਹ ਜਾਂਦੇ ਕਹਿੰਦੇ ਅੱਖਾਂ ਅੱਖਾਂ ਕੰਮ ਨਹੀਂ ਕਰਦੀਆਂ ਨਾ ਉੱਥੇ ਨੂੰ। ਮੰਨ ਹੋਏ ਨੇ। बाहर ਅਸਲ ਦੇ ਵਿੱਚ ਵੇਹੇ ਅੰਦਰ ਦਰਸ਼ਨ ਵੀ ਨਹੀਂ ਹੁੰਦਾ ਜੀ ਕੋਈ ਕਹੇ ਚੀਜ਼ ਨਹੀਂ ਆ ਕੋਈ ਗੱਲ ਆਪਾਂ ਕਹੀ ਵੀ ਉਹ ਗਰੇ ਉਹਦਾ ਕੋਈ ਐਗਜ਼ਾਮਪਲ ਇਦਾਂ ਦਾ ਹੈ ਉੱਥੇ ਸਮਝਣਾ ਦਰਸ਼ਨ ਸੀ ਤਾਂ ਅੰਦਰ ਨੂੰ ਚੱਕ ਕੇ ਦਾ ਮਤਲਬ ਇਹ ਹੈ ਤੁਸੀਂ ਤਰ ਉਹ ਜੋ ਕਹਿ ਰਿਹਾ ਉਹਨੂੰ ਸਰੋਗ ਗਿਆਨ ਕਰਾ ਰਿਹਾ ਤੁਹਾਨੂੰ ਗੁਰਮਤ ਉਹ ਹੀ ਦੇ ਰਿਹਾ ਉਹ ਸਮਝਾ ਰਿਹਾ ਹੈ ਜੀਵਨ ਕਿਵੇਂ ਜਿਉਣਾ ਕੱਲੇ ਰੱਬ ਤੁਸੀਂ ਆਏ ਹੋ ਕੀ ਕਰਨਾ ਹੈ ਕੀ ਨਹੀਂ ਕਰਨਾ ਉਹਦੇ ਰਸਾਲ ਚੱਲੋ ਕੋਈ ਸਮਝਾ ਲੈ ਉਹ ਦੱਸੂਗਾ ਸਿਆਣੇ ਦੱਸ ਤਾ ਹੁੰਦਾ ਨਿਆਣੇ ਨੂੰ ਕੀ ਕਰ ਲੈ ਨਾਮ ਦਾ ਬਦਲਣਾ ਕਿਉਂ ਸੋਝੀ ਜਿਹੜਾ ਬੱਚਾ ਉਹ ਤੋਂ ਸੋਝੀ ਸਿਆਣੇ ਤੋਂ ਹੋਊਗਾ राम नागा ते मरया न मरदा सजी तो सजे उंदा ए जमदा मरदा फिर सोजी उनु ज्यादा कैनु ज्यादा <coughs> सोजी इनु ज्यादा कैना गल आहिना बड़े दी नहीं मिलगा क्यों नहीं मिलगा बंदा के बनु ज्यादा ਬੰਦਾ ਵੀ ਮਨੋਂ ਅਕਲ ਜਾਦਾ ਉਹਦਾ ਜਿਆਦਾ ਅਕਲ ਬੰਨਣੇ ਉਹਦੀ ਬੇਫਿਕਰੀ ਹੁੰਦੀ ਉਹ ਜਿਆਦਾ ਅਕਲ ਬੰਨਣ ਦੇ ਵਾਸਤੇ ਦੁੱਖਦਾਈ ਹੁੰਦਾ ਇਤਬਿਆ ਇਹ ਮੰਦੀ ਫੇਤਰਦਾ ਬੰਦਾ ਸੁਭਾਅ ਹੈ ਅੱਜ ਕਾ ਅੰਦਰ ਸੰਕਿਛ ਬਸਾ ਖੰਡ ਮੰਡਲ ਪਤਾ ਨਾ ਆ ਜਾਂਦੇ ਹੈ ਇਹ ਗਰੋਹ ਕਿਸ ਬੰਦੇ ਪਿੰਦਰੇ ਹੈ ਜਦ ਇਹ ਟੌਪਿਕ ਆਊਗਾ ਫਿਰ ਕਰਾਂਗੇ ਇਹਨਾਂ ਹਲੇ ਟੌਪਿਕ ਸਿਰਫ ਨਾਮ ਔਰ ਯਾਦ ਹੈ ਪਤਾ ਹੈ ਸਾਰਾ ਉਹ ਬਾਕੀ ਟੌਪਿਕ ਆਉਗਾ ਬਾਰਕੋਲੇ ਇੱਥੇ ਸਿਰਫ ਟੌਪਿਕ ਬਰ ਰਾਮ ਅੰਦਰ ਹੈ ਅੰਦਰੋਂ ਹੀ ਨਾਮ ਮਿਲਣਾ ਵਾਹ ਰਾਮ ਤੋਂ ਜੇ ਗਿਆਨ ਲੈਣਾ ਜਿਹਦੇ ਕੋਲੋਂ ਤੁਸੀਂ ਗਿਆਨ ਲੈਣਾ ਉਸਦੇ ਘਰ ਉਸਦੇ ਸਕੂਲ ਚ ਉਸਦੇ ਆਸ਼ਰਮ ਤੇ ਜਾਣਾ ਪਊ। ਅੱਗੇ ਆਸ਼ਰਮ ਬਣੇ ਹੋਏ ਸੀ ॠषि मुनियों ਦੇ। ਹੁਣ ਵੀ ਬਣੇ ਹੋਏ ਨੇ ਕਾਲਜ ਬਣੇ ਹੋਏ ਨੇ। ਜੇ ਕੋਈ ਪੜ੍ਹਨਾ ਨੂੰ ਕਾਲਜ ਚ ਜਾਣਾ ਪੈਣਾ ਨਾ ਸਕੂਲ ਚ ਜਾਣਾ ਪਊ ਲੋ। ਪਰ ਰਾਮ ਅੰਦਰ ਹੈ। ਜੇ ਉਹ ਤਾਂ ਲੈਣਾ ਤੁਸੀਂ। राम राम करता समझ गए राम ना पाए राम जी प्राप्ति करना राम दा दर्शन करना सुन दर्शन के वो राम कोर्ट सानो झलक राम अंदर और अंदर दी की निशानी है किथे है कोई गल में इकट्ठे हो कोई गल में इथे ਕੋਈ ਕਹੇ ਹੁੰਮੜਾ ਚਾਹੇ ਕੋਈ ਕਿਤੇ ਕਹੇ ਕੋਈ ਕਿਤੇ ਕਹੇ ਨਿਸ਼ਾਨੀ ਇਹ ਸਭ ਕੱਟ ਰਾਮ ਬੋਲੇ ਕੱਟ ਦੇ ਵਿੱਚ ਬੋਲਦਾ ਜਿਹੜਾ ਉਹ ਰਾਮ ਮੰਦੇ ਅੰਦਰ ਉਹ ਆਵਾਜ਼ ਉਹਦੀ ਹੁੰਦੀ ਹੈ ਤੇਰੇ ਅੰਦਰ ਹੈ ਉਹ ਦੂਏ ਲਫਜ਼ ਜੇ ਹੈ ਜਿਹੜਾ ਖੋਜਦਾ ਹੈ ਮਨ ਉਹਦੇ ਹੀ ਅੰਦਰ ਹੈ ਬੁੱਧੀ ਦਾ ਜਿਹੜਾ ਮਨ ਉਹਦੇ ਅੰਦਰ ਹੈ ਜਾਂ ਕਹਿੰਦਾ ਮੈਂ ਮਨ ਮੇਰਾ ਮਨੋ ਮੇਰੇ ਮਨ ਦੇ ਅੰਦਰ ਇਹ ਹੁਣ ਬਾਗਾਂ ਦੇ ਕਿਰੋਲੇ ਚਲਿਆ ਸੀ ਬਾਹਰ ਨੂੰ ਬ੍ਰਹਮ ਪੂਜਣ ਕਬੀਰ ਦਾ ਗੁਰੂ ਉਹਨੇ ਥਾੜੀ ਰੱਖੀ ਨਹੀਂ ਉਹਨੇ ਕਾਇ ਕਿ ਬੁਰੋ ਬ੍ਰਹਮ ਬਤਾਇਓ ਮਹਨ ਮਹਨ ਉਹਨੇ ਬ੍ਰਹਮ ਕਹਤਾ ਬ੍ਰਹਮ ਰਾਮ ਕੋਈ ਗੱਲ ਹੈ ਇਕ ਕੋਆ ਨੀ ਕੋਈ ਆਦਮੀ ਦੇ ਦੋ ਨਾਮ ਹੈ ਬ੍ਰਹਮ ਵਿਯੋਗ ਨੂੰ ਕਹਿੰਦੇ ਰਾਮ ਵਿਯੋਗ ਹੁੰਦਾ ਹੈ ਰਾਮ ਦੇ ਤਾਲੀਕਾ ਦੇ ਨਾਮ ਹੁੰਦਾ ਰਾਮ ਦੇ ਨਿਸ਼ਾਨ ਕਰਦਾ ਦੇਹ ਤਾਲਨ ਕਰਦਾ ਕ੍ਰਿਸ਼ਨ ਮਹਾਭਾਰਤ ਦਾ ਕ੍ਰਿਸ਼ਨ ਭਗਤਾ ਦਾ ਰਾਮ ਭਗਤਾ ਦਾ ਹੈ ਇੱਥੇ ਆ ਕੇ ਦੇਖਣ ਉਹਨਾਂ ਨੇ 라ਉ ਹਉਦੇ ਤਾਰੇ ਵਿਚਾਰ ਮੈਣ ਵਾਲੇ ਉਹ ਕਹਿੰਦੇ ਬਿਲਕੁਲ ਗਲਤ ਅਰਥ ਕਰਤਾ ਉਹ ਇੱਕ ਤੋਂ ਕਰਤ ਪੈ ਗਿਆ ਵਿਚਾਰ ਅੰਡ ਰੂਪ ਚ ਹੁੰਦਾ ਜੋਤ ਰੂਪ ਚ ਹੁੰਦਾ ਭਰ ਵਿੱਚ ਘਰੀ ਹੋਈ ਜੋਤ ਜਿਹਨੂੰ ਕਹਿੰਦੇ ਬ੍ਰਹਮ ਅੰਡ ਉਹ ਹੁੰਦਾ ਦਾਪਰ ਜਾ ਕੇ ਉਤਾਰ ਲੈਂਦਾ ਕ੍ਰਿਸ਼ਨ ਦੇ ਰੂਪ ਉਹ ਦੇਖੋ ਉਸ ਗੱਲ ਦੀ ਬ੍ਰੋਡਤਾ ਕਰ ਰਹੀ ਹੈ ਬਾਣੀ ਇਹ ਵਿਚਾਰ ਧਾਰਕ ਫਰਕ ਦੱਸੇ ਨੇ ਗ੍ਰੰਥਾਂ ਦੇ ਪਿਛਲੇ ਆnde ਦੁਆਪਰ ਕ੍ਰਿਸ਼ਨ ਬਰਾਰ ਕੰਤ ਕਰਤਾਰਥ ਕਿਉ ਕਿਉ ਉਗਰਸਾਨ ਕੋ ਰਾਜ ਉਹ ਜਿਹੜਾ ਉਗਰਸਾਨ ਕੋੜਾ ਉਗਰਸਾਨ ਨਾ ਪਾਇ ਭਗਤਾ ਪਾਦੀਓ ਉਗਰ ਸੈਨਸੀ ਜਿਹੜਾ ਸੰਸਾਰ 'ਚ ਰਾਜ ਕਰਨ ਵਾਲਾ ਸੰਸਾਰ ਦਾ ਰਾਜ ਚੌੜ ਵਾਲਾ ਉਗਰ ਸੈਨ ਉਹਦਾ ਉਗਰਵਾਦੀ ਹੁੰਦਾ ਹਾਂ ਪਰ ਉਹ ਰਾਜ ਕਰਦਾ ਸੰਸਾਰ ਦੇ ਰਾਜਾ ਨੂੰ ਕਰਵਾਦੀ ਹੈ ਰਾਜਾ ਜਾਂ ਹਮਲਾ ਕਰਦਾ ਉਗਰਵਾਦੀ ਹੈ ਹਮ ਹੋ ਜਾਂ ਜਦੋਂ ਸਰਵਾਰਾ ਹਮਲੇ ਕਰਦੇ ਤੇ ਕੌਣ ਕੀ ਹੋ? ਕੌਣ ਸੀ? ਅਨਸਰਵਾੜੀ ਜਿਹੜੇ ਆ ਕੇ ਹਮਲਾ ਕਰਦੇ ਨੇ ਕੌਣ ਨੇ? ਸੰਸਾਰੀ ਦਾ ਚਾਣ ਰਾਜ ਵੀ ਸਿੱਖਾਂ ਨੂੰ ਕਰਵਾਤੀ ਤਾਂ ਹੀ ਕਹਿੰਦੇ ਨੇ ਜਿੱਥੇ ਜਾ ਕੇ ਹਮਲੇ ਕਰਦੇ ਸੀਗੇ। ਜੇ ਰਾਜ ਹੋ ਗਿਆ ਉੱਪਰ ਲੈ ਗਿਆ ਨਾਲ। ਫਿਰ ਰਾਜਾ ਬਣ ਗਿਆ ਰਜੀਤ ਸਿੰਘ। ਉੱਪਰ ਬਾਤ ਰਾਜ ਮਿਲਿਆ। ਤਾਲਵੰਡ ਕੋ ਨਾ ਗੁਰਬਾਦੀ ਰਾਜ ਹੋ ਗਿਆ ਹਟ ਗਿਆ ਗੁਰਬਾਦੀ ਨਾ ਤਾਂ ਇੱਕ ਮਨ ਨੇ ਦੂਏ ਮੰਤੇ ਰਾਜ ਕਰ ਲਓ ਗੁਰਬਾਦੀ ਤੋਂ ਸਵਾ ਹੋ ਨਹੀਂ ਸਕਦਾ ਮੈਂ ਲੋਕੀ ਕੀਤਾ ਹਜਾਇਜ਼ ਹੈ ਮੈਂ ਉਹ ਵੀ ਬੁਰਾ ਕੰਮ ਕੀਤਾ ਹਜਾਇਜ਼ ਹੈ ਹਮ ਮੇਰੇ ਨੂੰ ਥੋੜਾ ਬਹੁਤ ਸਾਰਾ ਘਟਿਆ मतलब मेरे जना बाप नहीं कीता तू गलत है मैं बहुत आ भागताने वाला कोई गलत नहीं सीखा ना कतले आम होगा कोई उगरवा नहीं सी हो ऐते कसे बंदे रे चार बंदे बाहर ते उगरवा दोगे उगरवादी नहीं सी पीढ़ि जिना ने कतल करते ये संसारी सोच है सच ना बोलना गुरुवाणी सच बोलनी ਸੰਸਾਰ ਸੱਚਾ ਵਸੂ ਵਿੱਚ ਕੋਈ ਨਹੀਂ ਸੰਸਾਰ ਕੂੜਾ ਕੂੜ ਦਾ ਨਾ ਸੰਸਾਰ ਕੂੜ ਰਾਜਾ ਕੂੜ ਸਭ ਪਹਿਲਾ ਰਾਜਾ ਕੂੜ ਹੈ ਤਾਂ ਪਰਜਾ ਕੂੜ ਹੈ ਰਾਜੇ ਤੋਂ ਸ਼ੁਰੂ ਰਾਜਾ ਨੂੰ ਰਾਜਾ ਕਥਾ ਰਾਜਾ ਸੱਚਾ ਸੱਚ ਦਾ ਰਾਜ ਨਾਨਕ ਰਾਜ ਚਲਾਇਆ ਸੱਚ ਨਾਨਕ ਨੂੰ ਪਰਜਾ ਵੀ ਸੱਚੀ ਹੈ ਗੁਰੂ ਸਾਹਿਬ ਸੱਚੇ ਨੇ ਸਚਿਆਰੇ ਸੰਸਾਰੀ ਰਾਜ ਤੇ ਖਲਾਬ ਰਾਜ ਆਹ ਤਾਂ ਸੰਸਾਰੀ ਰਾਜ ਨੂੰ ਜਿੱਦਣ ਇਹਦਾ ਰਾਜ ਹੋ ਗਿਆ ਸੰਸਾਰੀ ਰਾਜ ਤੇ ਖਲਾਬ ਹੋ ਗਏ بڑے بڑے ਰਾਜਾਂ ਦੇ ਪਾਪ ਕੰਬ ਜਾਂਦੇ ਨੇ ਗੁਰਮਤ ਸੁਣ ਕੇ ਪਰ ਕੰਬਦੇ ਰਹਿਣਗੇ ਕੰਬਣ ਦੇ ਇਹ ਸਾਰੇ ਉਗਰਵਾਦੀ ਇਕੱਠੇ ਹੋ ਜਾਂਦੇ ਨੇ ਤੇ ਖਲਾਬ ਹੁਣ ਚਾਹੁੰਦੇ ਨੇ ਹੁਣ ਕੋਈ ਦੋਏ ਉਗਰਵਾਦੀਆਂ ਤੋਂ ਦੁਖੀ ਹੋ ਕੇ ਚਾਹੁੰਦੇ ਨੇ ਉਹਨਾਂ ਦੇ ਪਤੰਦਰੋਂ ਕੇ ਬਾਸੀ ਪੈਦਾ ਹੋਏ ਨੇ ਜਿਹੜੇ ਇਹਨਾਂ ਦੇ ਗੱਲ ਨੂੰ ਕਹਿੰਦੇ ਜਿਹੜੇ ਇਹਨਾਂ ਦੇ ਗੱਲ ਨੂੰ ਜਿਹੜੀਆਂ ਇਹਨਾਂ ਨੇ ਕੀਤੀਆਂ ਨੇ ਨਾ ਲੋਕਾਂ ਜਾਤੀਆਂ ਪੈਦਾ ਹੋ ਤੋ ਐਕਸ਼ਨ ਐਂਡ ਰਿਐਕਸ਼ਨ ਆ ਥਿਊਰੀ ਹੈ ਇਹਨਾਂ ਦੇ ਜਿਹੜੇ ਐਕਸ਼ਨ ਨੇ ਦੁਨੀਆ ਦੀ ਪੀੜਾ ਨੂੰ ਸਵੇ ਸਨ ਨਾ ਸਮਝਣਾ ਉਹਦਾ ਹੱਲ ਨਾ ਕਰਨ ਇਹ ਐਕਸ਼ਨ ਇਹਦਾ ਲੋਕ ਰਾਜ ਦਾ ਐਕਸ਼ਨ ਹੈ ਉਹਦਾ ਜਿ ਐਕਸ਼ਨ ਪਬਲਿਕ ਚ ਹੁੰਦਾ ਵਾ ਹੈ ਉਹ ਆਪਣੇ ਸਾਹਮਣੇ ਕਿਤੇ ਹਟਾਲਾ ਹੁੰਦੀਆਂ ਨੇ ਗੋਲੀਆਂ ਚੱਲਦੀਆਂ ਨੇ ਕਿਤੇ ਕੁਝ ਹੁੰਦਾ ਕਿਤੇ ਕੁਝ ਹੁੰਦਾ ਹੌਲੀ ਹੌਲੀ ਇਹੀ ਰੂਪ ਧਾਰਨ ਕਰਦਾ ਹੈ ਅਗਰੇਜ਼ਾਂ ਦੇ ਰਾਜ ਵਿੱਚ ਇਹੀ ਰੂਪ ਧਾਰਨ ਕੀਤਾ ਹਾਂ ਵੀ ਰਹਿੰਦੇ ਨੇ ਕਿ ਜੱਲਿਆਂ ਵਾਲੇ ਬਾਗ ਦੇ ਵਿੱਚ ਗੋਲੀ ਚਲਾਈ ਗੋਰਬਾਦੀ ਨਹੀਂ ਸੀ ਜਿਹਨੇ ਗੋਲੀ ਚਲਾਈ ਹੈ ਪਰ ਨਹੀਂ ਕਿਉਂਕਿ ਸਰਕਾਰ ਤੋਂ ਮੰਨਤਾ ਪ੍ਰਾਪਤ ਹੋ ਗਈ ਜਿਹੜਾ ਸਰਕਾਰੀ ਮੰਨਤਾ ਪ੍ਰਾਪਤ ਜ਼ੁਲਮ ਹੈ ਉਹ ਕਰਵਾ ਨਹੀਂ ਹੁੰਦਾ ਹੂੰ ਸਰਕਾਰ ਦੇਸ਼ ਰક્ષਕ ਮੰਨਤਾ ਨਹੀਂ ਹੈ ਉਹ ਕਰਵਾਉਂਦਾ ਬਸ ਕੰਮ ਲੋਏ ਕੋਈ ਹੁੰਦਾ ਕਾਰੀ ਹੁਕਮ ਨਾਲ ਗੋਲੀ ਚੱਲ ਗਈ ਜਿੰਨੇ ਆਪ ਵੀ ਵਰਜੀ ਮਾਰ ਕੋਈ ਉਕਰਵਾਦ ਨਹੀਂ ਉਹ ਉਹਦੀ ਲੋੜ ਸੀ ਇਹ ਦੂਜਿਆਂ ਨੇ ਮਾਰ ਉਹਦੀ ਲੋੜ ਨਹੀਂ ਸੀ ਸਰਕਾਰ ਨੂੰ ਲੋੜ ਨਹੀਂ ਸੀ ਉਹਨਾਂ ਨੂੰ ਲੋੜ ਉਹ ਇਸ ਸੰਸਾਰ ਦੀ ਰੀਤ ਹੈ ਔਰ ਇਹ ਇਦ ਰਹਿਣੀ ਹੈ ਇਹ ਰੀਤ ਰਹਿਣੀ ਹੈ ਇਹਨੂੰ ਕੋਈ ਬਦਲ ਨਹੀਂ ਸਕਦਾ ਕੋਕਾ ਕੋਲ ਰਾਜਾ ਕੋਲ ਪ੍ਰਜਾ ਕੋਲ ਸਭ ਸੰਸਾਰ ਜੇ 2000 ਆਜ ਆ ਗਿਆ ਕਰਦੇ ਉਹ ਵੀ ਉਹੀ ਜਿਹੜੇ ਜੋਗਰਵਦੀ ਨੂੰ ਘਟੋਬ ਨਹੀਂ ਹੋਵੇ ਜਾਤੀ ਉਹ ਵੀ ਕਰ ਨੂੰ ਜਾਤੀ ਉਹ ਵੀ ਕਰ ਲੇ ਹੁਣ ਆਪਣੇ ਨਹੀਂ ਸਰਕਾਰਾਂ ਬਦਲੀ ਤਾਂਸੂ ਦੋ ਵੀ ਸੀ ਫਿਰ ਕਹਿੰਦੇ ਆ ਪਿਛਲੇ ਚੰਗੇ ਸੀ ਹੁਣ ਕਹੀ ਜਾਂਦੇ ਅੰਗਰੇਜ਼ ਚੰਗੇ ਸੀ ਸਭ ਗੁਰਦੁਆਰੇ ਖੋਲੇ ਉਹ ਕਹਿੰਦੇ ਉਹ ਦੋ ਜੰਗੇ ਸੀ ਇਹਨਾਂ ਨੂੰ ਸਾਰੇ ਉਹੇ ਜਿਹੇ ਆਉਣਗੇ ਇੱਕ ਤੱਕ ਕਹਾ ਜਾਉ ਇਕੱਠ ਨਹੀਂ ਹੁੰਦਾ ਜਿਹੜਾ ਅੰਦਰ ਬੀਜ ਹੋਰ ਬੁੱਟਣਾ ਕੰਮ ਕਰ ਕੰਮ ਇੰਨਾ ਸਿੱਖ ਸੰਗਤ ਦਾ ਪੈਸਾ ਨਹੀਂ ਸੀ ਉਹਨਾਂ ਕੋਈ ਜਾਂਦਾ ਪੁਜਾਰੀਆਂ ਕੋਲ ਜਿੰਨਾ ਹੁਣ ਜਾਂਦਾ ਕਿਸੇ ਨੇ ਜਾਂਦਾ ਗੁਰਦੁਆਰੇ ਦੀ ਮਾਇਆ ਜਿਹੜੀ ਸੀ ਉਹੀ ਕਰ ਦਿੱਤੇ ਹੋ ਬੜੀ ਮੋਟੀ ਜਿਹੜੀ ਉਹ ਅੰਦਰ ਦੀ ਜ਼ਮੀਨ ਤੋਂ ਜਿਹੜੇ ਮਹੰਤ ਸੀਗੇ ਇਹ ਤਾਂ ਆਰ ਬਾ ਖਰ ਬਾ ਪਈ ਹੱਸਣ ਦਾ ਵੀ ਹਣ ਪੀ ਜਾਂਦੇ ਰੱਡ ਦਾ ਐਸੋ ਉਦੋਂ ਇੰਨੇ ਲੋਕ ਸਿੱਖ ਸੀ ਸਿੱਖੀ ਦੇ ਨੋਤੇ ਰੇਲਾ ਰੋਕ ਲੀਆਂ ਕਿਉਂਕਿ ਨਾ ਔੜੋ ਕੰਮ ਨਹੀਂ ਹੋਣਾ ਤੁਸੀਂ ਦੇਖੋਗੇ ਕੋਈ ਕਰਦੇ ਜੋ ਮਰਜ਼ੀ ਕਰ ਲਓ ਆ ਰਾਜਵਾਲਾ ਰਾਜਨੀਤ ਟੌਫੀਆਂ ਵੰਡ ਕੇ ਜੋ ਮਰਜ਼ੀ ਕਰਾ ਲਓ ਸੱਤੇ ਮਰਜ਼ੀ ਬੰਦੇ ਕਰਾ ਲਓ ਧਰਮ ਯੁੱਧ ਤਾਂ ਕੋਈ ਨਹੀਂ ਨਾ ਧਰਮ ਯੁੱਧ ਜਦ ਤੀ ਗਿਆ ਧਰਮ ਯੁੱਧ ਦੀ ਗੱਲ ਕੀਤੇ ਦਸਮ ਬਾਸ ਜਣ ਅਵਰ ਨਾਲ ਨਹੀਂ ਪ੍ਰਭ ਦਸਮ ਕਥਾ ਪਾਪਉਤ ਦਰੂਲੇ ਵਿੱਚ ਕਥਾ ਕਾਦੀ ਹੈ ਭਗਵਤ ਕੀ ਭਗਤੀ ਹੈ ਗੁਰਮਤ ਹੈ ਭਗਵਤ ਕੀ ਕਥਾ ਹੈ ਕਿਸੇ ਰਾਮ ਦੀ ਕਥਾ ਨਹੀਂ ਇਹ ਉਹੀ ਭਗਤੀ ਹੈ ਗੁਰਮਤ ਹੈ ਦਸੂਮ ਕਥਾ ਭਗਵਤ ਕੀ ਪਾਖਾ ਕਰੀ ਬਣਾਏ ਵਧੀਆ ਭਾਸ਼ਾ ਦੇ ਵਿੱਚ ਮਣ ਬਣਾ ਕੇ ਪੇਸ਼ ਕੀਤੀ ਹੈ ਤੁਹਾਡੇ ਸਾਹਮਣੇ ਇਹ ਸੰਸਾਰੀ ਭਾਸ਼ਾ ਵਰਗੋ ਉਹ ਦੂਜੀ ਭਾਸ਼ਾ ਜਿਹੜੀ ਨਰਮ ਭਾਸ਼ਾ ਦਿੱਤੀ ਹੋਈ ਐ ਇਹਦੀ ਭਾਸ਼ਾ ਔਖੀ ਐ। ਪਾਖਾ ਗਾਇਤਨ ਉਹਦੇ ਪਾਖਿਆ ਭਾਵਾ ਬਾਰ ਗਾ ਕੇ ਜਿਆਦਾ ਜੁਮੇ ਲਖੜਾ ਔਖਾ ਕਰਤਾ ਕਰੂ। ਉਹ ਵੇਦ ਪੜ੍ਹਿਆ ਹੋਣੇ ਵਾਸਤੇ ਆ ਵਾਲੀ। ਜਿਹੜੇ ਵੇਦ ਨੇ ਉਹ ਸਮਝਣ ਇਹ ਦਾਸੂ ਦੀ ਬਾਣੀ ਐ ਸਾਡੇ ਵਾਸਤੇ। ਜਿਹੜੇ ਆਮ ਨੇ ਅਨੁਭਵ ਆਖਾਂ ਕਰੀ ਬਣਾਏ ਅਵਰ ਵਾਸਨਾ ਨਾ ਹੈ ਪ੍ਰਭ ਤਰੁਨ ਜੁਗਤ ਕੇ ਚਾਹੇ ਮੇਰੇ ਵਿੱਚ ਰਾਜ ਕਰਨੀ ਕੋਈ ਵਾਸਨਾ ਨਹੀਂ ਹੈ ਤੁਸੀਂ ਕਿ ਮੈਂ ਕਹਿੰਦਾ ਰਾਜ ਕਰੇਗਾ ਅਵਰ ਵਾਸਨਾ ਨਾ ਪ੍ਰਭ ਤਰੁਨ ਜੁਗਤ ਕੇ ਚਾਹੇ ਆ ਨਿਆਣਾ ਦਾ ਝੰਡਾ ਸਾਜਦਾ ਹੋਰ ਕੋਈ ਵਾਸਨਾ ਨਹੀਂ ਸੱਚ ਉੱਤੇ ਆ ਜਵੇ ਝੂਠ ਜਲੇ ਰਹੇ ਸੱਚ ਦੇ ਝੰਡਾ ਵਰਦਾਰ ਪੈਦਾ ਕੀਤੇ ਸੀ ਇਹੇ ਝੂਠ ਦੀ ਨਦੀ ਝੜ ਗਏ ਝੂਠ ਦੀ ਨਦੀ ਆ ਰਹੀ ਹੈ ਝੂਠ ਨਦੀ ਹੁੰਦੀ ਹੈ ਦੀ ਨਦੀ ਝੂਠ ਦੀ ਨਦੀ ਹੈ ਲੋਭ ਲੈਹ ਝੂਠ ਦੀ ਨਦੀ ਹੈ ਵਾਹਿਗੁਰੂ ਪੈਰੇ ਪੈਰ ਇਹਦੇ ਦਵਾਰਾਂ ਪਰ ਡਰਦੇ ਅਤਵਾ ਤੋਂ ਰੱਖਣੂ ਪੈਰ ਦੂਏ ਪਾਸੇ ਦੇ ਅੰਦਰ ਆਪ ਲੜੂ ਨਾ ਫੌਜ ਲਾਉ ਦੂਏ ਪਾਸੇ ਕਰ ਆਪਣੀ ਫੌਜ ਨਹੀਂ ਕਰ ਬੈਣਦੀ ਨਾ ਆਪ ਲੜ ਪਟਵੀਰਨ ਸੰਨ ਬਾਹਰ ਮਗਾਉਂ ਗੋਚੇ ਕਮਾਉਣ ਕੇ ਦੇਖੋ ਤਾਂ ਸਹੀ ਕਮਾਉਣ ਨਾਲ ਚਪਾ ਕੇ ਕਿਉਂ ਮੈਲੇ ਆਪਣਾ ਨੂੰ ਘੇਰ ਕੇ ਗੁਰਮਤ ਤੇ ਵਰਡ ਚ ਇੱਕ ਮੌਦਾ ਦ੍ਰਿਸ਼ ਘੜਾ ਹੋਇਆ ਹੈ ਜਦੋਂ ਮਨ ਮਨੋ ਬਸਾਰਿਆ ਹੋਇਆ ਸੀ ਨਾ ਇਹ ਤਾਂ ਦੂਰ ਚਲੇ ਜਾਂਦੇ ਨੇ ਜੋ ਜੋ ਮੋਹ ਸਾਹਮਣੇ ਆਇੰਦੇ ਗੁਰਬਤ ਦੇ ਨੇੜੇ ਨੂੰ ਆਉਂਦੇ ਲੋਕ ਦਰਦੇ ਆ ਕਰ ਗਾ ਪਾਠ ਕਰੋ ਹਣ ਪਹਿਲਾਂ ਸੁਣੇ ਜਾਂ ਨਾ ਸੁਣੇ ਦਰਦੇ ਤਾਂ ਆਪ ਹੁੰਦੇ ਨੇ ਵੀ ਸਾਡੇ ਨੂੰ ਵੀ ਕੱਲ ਨੂੰ ਐਹੀ ਹੋਣੀ ਬਹੁਤ ਕੋਈ ਧਰਮ ਲਿਆਓ ਮੂਰੇ ਬੂਰੇ ਧਰਮ ਖੜੂਆ ਹੁਣ ਸੱਚਾ ਦੂਏ ਪਾਸੇ ਧਰਮ ਹੋਣਾ ਚਾਹੀਦਾ ਪਰ ਧਰਮ ਦਾ ਨਿਸ਼ਾਨਾ ਕੀ ਹੈ ਟਾਰਗੇਟ ਕੀ ਹੈ ਉਹਨਾਂ ਦਾ ਉਹਨਾਂ ਦਾ ਵੀ ਟਾਰਗੇਟ ਰਾਜ ਕਰਨਾ ਹੈ ਸੰਸਾਰੀ ਦਸੋਂ ਪੰਜਾ ਦਾ ਟਾਰਗੇਟ ਈ ਹੈ ਇਹਦਾ ਆਪਣਾ ਦੋ ਨੰਬਰ ਦੇ ਧਰਮ ਨੇ ਗੁਰਮਤ ਤੋਂ ਕੱਢ ਗਿਆ ਪਰ ਘੱਡੀ ਵਾਲੇ ਵੀ ਬਸਤ ਪਾਉਣੇ ਨੇ ਉਹਨਾਂ ਆ ਰਾਜ ਦੀ ਗੱਲ ਕਿਸੇ ਨੇ ਨਹੀਂ ਕੀਤੀ ਦਸ਼ਮ ਪਾਛੇ ਦੇ ਰਾਜ ਦੀ ਆਪਣਾ ਆਪਣੇ ਰਾਜ ਦੀ ਕਰ ਉਹਨਾਂ ਨੇ ਆਪਣਾ ਕੁਰਸੀ ਤੋਂ ਖਤਰਾ ਪੈ ਰਿਆ ਕਰ ਉਹਦਾ ਦੇਖਦੇ ਨਹੀਂ ਇਹਦੇ ਸਿੰਘ ਪਾਗਲ ਪਾਗਲ ਜਾਣਦੇ ਨੇ ਸਾਰਿਆਂ ਨੂੰ ਇਹ ਪਾਗਲ ਪਾਗਲ ਨਾ ਤੇ ਥਰੂ ਲੱਗਦੇ ਨੇ ਪਾਗਲ ਦਾ ਸੋਖਾ ਵੀ ਲੈਂਦੇ ਨੇ ਇਸ ਆਣ ਜਿੱਤੇ ਦਾ ਆ ਨਾ ਕੋਣ ਕਿਤੇ ਸਖਾਣਾ ਤੁਸੀਂ ਕੇ ਰਹਿਣਾ ਮਜ਼ਾਕ ਦੀ ਗੱਲ ਹੈ ਕੋਈ ਘਰ ਛੱਡ ਕੇ ਲਪਟੋ ਕੇ ਦਿਖਾਓ ਤਾਂ ਸਹੀ ਗੱਲਾਂ ਹੀ ਕਰ ਲੈਂਦੇ ਅਸੀਂ ਬਹਿ ਕੇ ਸਾਰੀ ਜ਼ਿੰਦਗੀ ਦੇ ਕੇ ਦਿਖਾਓ ਫਿਰ ਫਿਰ ਮੰਨਦੇ ਕਿੱਥੇ ਦਿੰਦੇ ਨੇ ਸਰਸੇ ਜਾ ਕੇ ਦਿੰਦੇ ਨੇ ਉੱਤੇ ਕੀ ਹੁੰਦਾ ਚਾਲੀ 40 ਹਾਲੇ ਤੇ ਕਸ਼ਾਰੇ ਨਾਲ ਇੱਕੋ ਹੀ ਕਸ਼ਾਰਾ ਹੜਦਾ ਹੁੰਦਾ ਸੀ ਅਜਾਇਦਾ ਖੇਸ ਨੂੰ ਇਹਦੀ ਗਰੀਬੀ ਸੀ ਉਹੀ ਕਸ਼ਾਰਾ ਚਾਦਰ ਬਨ ਕੇ ਅੱਧਾ ਨਿਚੋੜ ਲੈਣਾ ਜੇ ਢੋਲਣਾ ਅੱਧਾ ਢੋਣਾ ਉਹ ਤਾਂ ਹੋ ਨਿਚੋੜ ਕੇ ਆ ਪਾਲਣੇ ਲਾਤੇ ਜਦੂਆ ਫਿਰ ਢੋਲਣਾ ਨਿਚੋੜਨੇ ਗਿੱਲਾ ਹੀ ਬਨ ਲੜਨ ਜੇ ਹੈਦੀ ਦੂਆ ਕੀ ਕਰੀ ਇਹ ਗੋਇੰਦਵਾਲ ਦਾ ਦੇਖਿਆ ਸੀ ਮੈਂ ਉੱਥੇ ਝੰਗ ਝੰਡਾਇਆ ਰਹੀ ਸੀ ਮਾਲਵਾ ਵਿੱਚ ਇਸ ਸਾਈਡ ਤੋਂ ਬਾਗੇ ਮੋਜੋ ਲੈਣ ਨੂੰ ਆਉਂਦਾ ਕੀ ਕਰੇ ਜ਼ਮੀਨ ਵੀ ਬਥੇਰੀ ਸੀ ਸੀ ਇਹ ਨਹੀਂ ਵੀ ਹਰ ਸਾਲ ਅੱਜਕੱਲ ਹਰੇ ਛੋਲਿਆਂ ਦਾ ਬੀਜ ਦੇ ਸੀ ਕਰਦੇ। ਕੋੜਿਆਂ ਨੂੰ ਦਿੰਦੇ ਸੀ। ਉਹ ਬਾਈਨੇ ਸਾਰਾ ਸਾਲ ਉਹਨੂੰ ਫੁੱਤੀ ਜਾਣੀਏ। ਬਣਾਉਣੇ ਨੇ। ਉਹ ਜਿੰਨੇ ਵੀ ਖੇਤ ਹੁੰਦੇ ਨੇ ਵਿਸਾਖੀ ਨੂੰ ਜਾਣਾ ਸਾਰੇ। ਜਿਹੜੇ ਨਾਲ ਨੇ ਘਰ ਜਾਣਾ ਮਾਂ ਨੂੰ ਬੜ ਜਾਂਦੇ ਸੀ ਜਦ ਤੱਕ ਉਹ ਨਹੀਂ ਰਹੀ ਫੁੱਤੀ ਗਏ। ਫਸਟ ਪਾਰ ਵੀ ਜਾਂਦੇ ਸੀ। ਕਿ ਹਾਲਜ ਭਾਈ ਜਣ ਵੀ ਬਹੁਤਾ ਨਹੀਂ ਸਾਡੇ ਕੋਲ ਨਾਲ। ਦੂਰੇ ਬਤਜਾ ਵੀ ਗਏ ਸਮਝ ਬਈਓ ਫਦੇ ਬੁਲਾ ਲਿਓ ਥੇ ਘਰ ਦੀ ਕਰਦੀ ਕੋਈ ਭਤੀਜਾ ਕੋਈ ਉਹ ਕਦੇ ਸੱਤੇ ਕਹਦੇ ਆਪੇ ਆ ਗਿਆ ਕਹਿੰਦੇ ਦਿਖਾਇਆ ਹੋਵੇ ਕੋਈ ਮਤਲਬ ਯਾ ਇਸ ਪ੍ਰੈਕਟੀਕਲ ਜਿਹੜਾ ਹੁੰਦਾ ਰ ਪ੍ਰੈਕਟੀਕਲ ਦੇ ਵਿੱਚੋਂ ਨਹੀਂ ਸਿੱਖਿਆ ਜਾਂਦਾ ਕੁਝ ਜਿਹੜੇ ਆਦਮੀ ਪ੍ਰੈਕਟੀਕਲ ਹੁੰਦੇ ਨੇ ਉਹਨਾਂ ਦਾ ਹੀ ਪ੍ਰਭਾਵ ਪੈਂਦਾ ਉਹਨੇ ਕਹਿੰਦਾ ਸੀ ਮੈਂ ਤੁਸੀ ਬਸ ਬਹੁਤਾ ਚੱਲਣਾ ਫੇਰ ਨਾ ਤੁਸੀ ਇੱਥੇ ਰਹੋ ਵਿੱਚ ਤੁਹਾਡਾ ਗੁਜ਼ਾਰਾ ਨਹੀਂ ਹੋਣਾ ਇੱਥੇ ਮਗਰ ਕੀ ਕਰਨੇ ਤੇਰੇ ਇੱਥੇ ਅਸੀਂ ਉਹ ਝਗੜੇ ਖਾਤਰ ਥੋੜੀ ਆਏ ਨਾ ਉੱਥੇ ਤਾਂ ਕੁਰਸੀਆਂ ਜ਼ਮੀਨਾਂ ਤੇ ਚੱਲ ਸੀ ਸਭ ਉੱਥੇ ਕੱਬ ਪੈਸੇ ਦਾ ਚਲੋ ਇਹਨਾਂ ਨੂੰ ਹੇਟਣ ਦੋ ਕਹਿ ਉਹ ਸੰਤਾ ਜੰਨੇ ਖੇਡ ਕੇ ਦੇਖੇ ਲਈ ਖੇਡ ਕੇ ਦੇਖੇ ਲਈ ਸੰਤਾ ਜੰਨੇ ਖੇਡ ਕੇ ਦੇਖੇ ਲਈ ਇਹਨਾਂ ਨੂੰ ਖੇਡ ਲੈਣ ਆ ਬੁੱਢਾ ਆਪਾਂ ਬਹੁਤਾ ਸਮਝਾਉਣੇ ਲੜਾਈ ਵਾਲੇ ਨਾ ਹਟਣ ਤਾਂ ਕਹਿੰਦੇ ਚੱਲ ਭਾਈ ਹੁਣ ਇਹਨਾਂ ਨੂੰ ਸਾਹ ਚਾਲ ਆਈ ਲੈਣ ਦਾ ਕੀ ਆ ਲੈਣ ਦਾ ਕੀ ਕੀ ਜਿਹੜਾ ਜਿਹੜਾ ਹਟਦੇ ਰੇ ਹਟਾਈ ਜਾਓ ਫਿਰ ਛੱਡ ਕੇ ਲੋਕ ਭਰੇ ਹੋ ਜਾਂਦੇ ਨੇ ਇਹਨਾਂ ਨੂੰ ਜਾਲ ਆ ਲਾਣ ਦੇ। ਉਹ ਦੇਖ ਲਿਆ ਹੁਣ ਹੈ। ਹੈ? ਪੋਲੇ ਦਾ। ਪਰ ਸਾਰੇ ਬਈ ਉਹ ਮਾਇਆ ਦੀ ਲੜਾਈ ਤਾਂ ਕੋਈ ਗੱਲ ਹੈ ਹੋਵੇ। ਕੇ? ਉਹਦੇ ਹੀ ਲੜਾਈ ਗੈਰ ਖੜਕਦੀ ਸੀ। ਲੜਾਈ ਸੀ। ਤਸ ਪਾਜ ਨੇ ਵਾਸਨਾ ਨਾ ਧਰਮ ਯੁੱਧ ਕੇ ਚਾਹ। ਇਵੀ ਅਭੀ ਲੜਾਈ ਹੈ ਜਿਹੜੀ ਆਪਾਂ ਲੜਨਾ ਹੈ ਇਹ ਲੜਾਈ ਨਹੀਂ ਲੜਾਈ ਕਹੀ ਹੈ ਮਨ ਮਤਾਂ ਦੇ ਖਰਾਬ ਕਰਨੋਂ ਦਿਲ ਡਰਿਆ ਸਮਝਾਉਣ ਵਾਸਤੇ ਲੜਾਈ ਜਿੱਤਣ ਵਾਸਤੇ ਲੜਾਈ ਸਮਝਾਉਣ ਵਾਸਤੇ ਜਿੱਤਣ ਵਾਸਤੇ ਲੜਾਈ ਸਮਝਾਉਣ ਵਾਸਤੇ ਪਗਲ ਨੂੰ ਰੂਪੀ ਸਮਝਾਉਣਾ ਕੋਈ ਪਾਈ ਤੇ ਨੋ ਡਰਾਵ ਨਾ ਕਰੋ ਜੇ ਤੁਸੀਂ ਚਾਹੁੰਦੇ ਹੋ ਵਾਕਈ ਨਾਮ ਜਪਣਾ ਤਾਂ ਨਾ ਆ ਹੁੰਦਾ ਹੈ ਜਪੀ ਦਾ ਬਸ ਜੇ ਤੁਸੀਂ ਸਾਈਡ ਲੈ ਕੇ ਖੜੇ ਹੋ ਵੀ ਅਸੀਂ ਤਾਂ ਐਵੇਂ ਕਰਨ ਖੜੇ ਰੋ ਕਿਹਦਾ ਕੋਈ ਨਹੀਂ ਕਰਦਾ ਉਹ ਬੰਦੇ ਹੋਰ ਤਾਂ ਨਹੀਂ ਫਸਲ ਕੇ ਨਵੇਂ ਜਿਹੜੇ ਖੜੇ ਹੋ ਖੜੇ ਰੋ ਨਵੇਂ ਬੰਦੇ ਤਾਂ ਨਹੀਂ ਫਸਣਗੇ ਨਾ ਜਾਣ ਤਾਂ ਨਹੀਂ ਫਸਾ ਸਕਣਗੇ ਤੁਸੀਂ ਕਹਾਂ ਨੂੰ ਨਾ ਹੋ ਪਰੰਤ ਜਿਹੜੇ ਫਸ ਗਿਆ ਫਸ ਗਿਆ ਉਹਨਾਂ ਜਿਵੇਂ ਮਰਜੀ ਛੱਡਦੇ ਨਹੀਂ ਲਫਦੇ ਰਹਿਣਗੇ ਰਾਮ ਰਾਮ ਕਰਤਾ ਸਭ जग ਫਿਰੇ ਰਾਮ ਨਾ ਪਾਇਆ ਜਾਏ ਸਾਰਾ ਸੰਸਾਰ ਰਾਮ ਰਾਮ ਕਰਦਾ ਰਾਮ ਰਾਮ ਕਰ ਰਾਇਆ ਪੰਡਤ ਨੇ ਅਦਰ ਜੀ ਪੰਡਤ ਆਰੰਦਵ ਵਿਰੋਧੀ ਹੈ ਕੋਕੇ ਰਾਵਣ ਪੰਡਤ ਹੈ ਉਹ ਰਾਜਾ ਅੰਦਰੋਂ ਪੰਡਤ ਰਾਮ ਤੇ ਰਾੜੇ ਸੀ ਅੰਦਰੋਂ ਪੰਡਤ ਆਵਲੜ ਸੀ ਆਖਰੀ ਰਾਜਾ ਸੀ ਰਾਵਣ ਬ੍ਰਾਹਮਣ ਬ੍ਰਾਹਮਣ ਦਾ ਜਿਵੇਂ ਉਹਨਾਂ ਦਾ ਰਾਜਾ ਹਿੰਦੂ ਰਾਜਾ ਕਹਿੰਦੇ ਨੇ ਆਖਰੀ ਸੀ ਉਹ ਵੀ ਖਤਮ ਹੋ ਗਿਆ ਇ런 ਵळे ਦੁੱਖ ਹੋਇਆ। 이런 ਹਰ ਆਉਲਦਾ ਰਾਜ ਕਾਤੋਂ ਮੈਨੂੰ ਤਾਂ ਬੜਾ ਦੁੱਖ ਹੋਇਆ। ਜਦੋਂ ਰਾਮਚੰਦ ਆਇਆ। ਉਤੇਆ। ਪੇਰ ਮੈਨਾਂ ਚ ਸਾਫ ਲਿਖਿਆ ਹੋਇਆ। ਉਹਦਾ ਰਾਜ ਦਿਲ ਘੋਰ ਲੱਗਿਆ। ਜਿਹੜੇ ਰਾਜਪਰਹੁਸੀ ਇਹਨਾਂ ਦੇ। ਉਹਨਾਂ ਨੇ ਤਾਂ ਬਾਈਕਾਟ ਕਰ ਤਾ ਸਵਾਰੋ ਦਾ। ਰਾਜਪਰਹੁਸੀ ਇਹ ਅਰੇਗਾ ਉਹ ਤਾਂ ਅਸਲ ਤਾਂ ਇਹ ਨਹੀਂ ਸੀ ਤਾਂ ਸਭ ਤੋਂ ਪਹਿਲਾਂ ਹਾਂਜੀ ਚੜਾਈ ਕਰ ਗਿਆ ਸੀ 14 ਸਾਲ ਬਵਾਸੇ ਬਵਾਸੇ ਤਾਂ ਸਭ ਭਰਤੇ ਰਾਜ ਕਰਿਆ ਤੇ ਭਰਤ ਨੂੰ ਤਾਂ ਸਭ ਭਰਤ ਦਾ ਰਾਮਚੰਦ ਵਾਲੇ ਰੋਦੀ ਰਾਜ ਕਰਦਾ ਸੀ ਇਹ ਕਹਿ ਕੇ ਵਿਰੋਧ ਕੀਤਾ ਕਿ ਬ੍ਰਾਹਮਣ ਤੇ ਆ ਕੀਤੀ ਇਹਨਾਂ ਬ੍ਰਾਹਮਣ ਮਾਰੇ ਕਿਉਂਕਿ ਬ੍ਰਾਹਮਣ ਭਾਈ ਸੀ ਨਾ ਤੇ ਔਰ ਰਾਵਣ ਦੇ ਜਿਹੜੇ ব্রাহ্মণ ਹੋਵੇ ਉਹ ਸਾਰਾ ਪਰਿਵਾਰੇ ব্রাহ্মণ ਸੀ ਔਰ ਆਪਣੇ ਹੱਥ ਨਾਲ ਤਿਲਕ ਨਹੀਂ ਦੇ ਸਕਦੇ ਜੋ ਅਸੀਂ ਕਹਿੰਦੇ ਵੀ ਭਾਈ ਗੁਰਬਾਣੀ ਤੋਂ ਖਲਾਫ ਹੈ ਨਾ ਅਸੀਂ ਨਹੀਂ ਬੰਦੇ ਠੀਕ ਹੈ ਉਹਨੇ ਸੈੱਟ ਲਿਆ ਠੀਕ ਲਿਆ ਲੇਕਰ ਬਾਅਦ ਦੇ ਵਿੱਚ ਉਹ ਲੋਨਾਂ ਨੇ ਬਾਰ ਉਹ ਦੂਏ ਪਿੰਡ ਤੇ ਕੇ ਗਰੀਬ ਜਿਹੜੇ ਸੀਗੇ ਸਰਜੂ ਦੇ ਦੇ ਪਾਰ ਵਾਲੇ ਪੂਰਤ ਉਤਰ ਕਰਾ ਲੇ ਤੋਂ ਅਜੂਰ ਤੇ ਦੱਸ ਕੇ ਬਣ ਕੇ ਉਹ ਰਾਜ ਹੋ ਨਾ ਉਹ ਦੇ ਵਿੱਚ ਰਾਵਣ ਦਾ ਨਹੀਂ ਰਿਆ ਬਾਦ ਦੇ ਵਿੱਚ ਸਰਵਤ ਹੋਏ ਨੇ ਪਹਿਲਾ ਖਰਾਬ ਇਸ ਕਰਕੇ ਰਵਣਾ ਵੀਜ਼ਾ ਲਿਖੇ ਨੇ ਲੈ ਕੱਲ ਮੇਰੇ ਕੋਲ ਸੀ ਬਹੁਤ ਕੁਝ ਇਹੋ ਜਿਹਾ ਲਿਖਿਆ ਕ੍ਰਿਸ਼ਨ ਦੇ ਖਿਲਾਫ ਕ੍ਰਿਸ਼ਨ ਵੀਰ ਦੇ ਖਿਲਾਫ ਦੇ ਖਿਲਾਫ ਤੇ ਬ੍ਰਾਹਮਣ ਖਿਲਾਫ ਨੇ। ਬ੍ਰਾਹਮਣ ਤੇ ਕ੍ਰਿਸ਼ਨ ਖਿਲਾਫ ਹੈ। ਜੇ ਪੜਦੇ ਪਤਾ ਨਹੀਂ। ਤੁਸੀਂ ਕਹ ਲਓ ਕ੍ਰਿਸ਼ਨ ਦੇ ਬ੍ਰਾਹਮਣ ਨਾਲ ਹੀ ਬ੍ਰਾਹਮਣ ਦੇ ਸਾਹਮਣੇ ਖਿਲਾਫ ਹੈ ਕ੍ਰਿਸ਼ਨ। ਕ੍ਰਿਸ਼ਨ ਬ੍ਰਾਹਮਣ ਦੇ ਖਿਲਾਫ ਨੇ 2000 ਦਾ ਵੈਰ ਦਿਖਾਇਆ ਹੋਇਆ ਹੈ। ਜੇ ਕੋਈ ਪਰਦਾਦਾਰ ਗਰੰਥ ਨੂੰ ਤਾਂ ਖੋਪੜੀ ਖੁੱਲਦੀ ਖੋਪੜੀ ਦਾ ਬੰਦ ਪਈ ਐ ਨਾ ਜੀ ਦੇਖਦੇ ਨੇ ਅੱਜ ਪਹਿਲੇ ਬ੍ਰਾਹਮਣ ਹੋਣ ਦੋਹਾਂ ਹੀ ਅਵਤਾਰਾਂ ਦਾ ਟਪਰਾ ਜਿਵੇਂ ਕਾਂਗਰਸ ਵਾਲੇ ਸੁਭਾਚੰਦਰ ਬੋਸ ਪਰਗਸੂਨ ਅੰਤਰ ਨੂੰ ਨੋਭਤ ਕਰਦੇ ਸੀ ਨਾ ਉਸ ਵੇਲੇ ਅੱਜ ਬਣਾ ਲਿਆ ਆਹੀ ਗੱਲ ਉਹਨਾਂ ਦੀ ਸੀ ਬ੍ਰਾਹਮਣਾਂ ਦੀ ਅੱਜ ਜੇ ਨਹੀਂ ਬਣਾਉਂਦੇ ਪਬਲਿਕ ਖਲਾਫ ਹੁੰਦੀ ਹੈ ਮਜਬੂਰੀ ਹੋ ਗਈ ਮਜਬੂਰੀ ਹੋ ਬੜਾ ਜਿਹੜੇ ਲੋਕ ਅਰੇਜਾਂ ਨਾਲ ਖੜੇ ਸੀ ਅੱਜ ਕਾਂਗਰਸ ਨਾਲ ਨੇ ਜਿਹੜੇ ਉਦੋਂ ਦਸਮ ਪਾਸ਼ਾ ਵੇਲੇ ਸਿੱਖ ਹੁੰਦੇ ਪਰਿਵਾਰ ਇੱਥੇ ਦੇ ਸਰਕਾਰ ਨਾਲ ਖੜੇ ਦੇ ਅੱਜ ਸਿੱਖ ਨੇ ਅੱਧੀ ਗੁਰਦੁਆਰਿਆਂ ਨਾਲ ਖੜੇ ਗੁਰਦੁਆਰਿਆਂ ਨੇ ਸਮਾ ਬਦਲਦਾ ਬਰਜਦੇ ਲੋਕ ਸਾਰੇ ਸਿੱਖ ਤੇ ਗਦੇ ਇਹ ਲੋਕ ਤਾਂ ਬਦਲ ਜਾਂਦੇ ਨੇ ਸਮਾ ਦੇ ਨਾਲ ਮੁੱਖਾ ਪਸਟ ਢੋਗਰੇ ਪਹਿਲੇ ਸਿੱਖ ਬਣ ਗਏ ਹੁਣ ਕੋਈ ਕਨਵੀਰ ਜਿਹੇ ਸਿੱਖ ਕਿਨੇ ਕਰੇ ਸਾਰੇ ਸਿੱਖ ਤੇ ਉਹਦੋਂ ਕਣ ਕੇ ਟਾਈਮ ਉਹਨਾਂ ਨੇ ਦੇਖਿਆ ਵੀ ਹੁਣ ਟਾਈਮ ਇਹ ਹੈ ਬਾਜਬ ਨੇ ਜਨਰਣਾਂ ਕੇ ਕਿਸ ਵੀ ਲੈ ਲੈ ਆ ਜੰਤਰਾ ਲੈ ਆਪਣੇ ਤਰੂ ਕਿਸ ਵੀ ਦੇ ਲੋ ਜੀਰ ਨੂੰ ਹਰਵਾ ਦੇ ਕਹਜੂ ਰਜਿਸ ਤੋਂ ਗਲਬਾ ਪਾ ਕੇ ਬੂਰੇ ਆਪਣਾ ਸਭ ਹੱਥੀ ਲੈ ਲੈ ਤੇ ਰਜਿਸ ਨੂੰ ਅਸਰੀ ਅਕਲ ਮੰਨ ਕੇ ਲਈ ਬੁੱਧੀ ਹਿੰਸੀ ਆਪਣੇ ਘਰ ਕੰਦੇ ਵਿਸ਼ਵਾਸ ਨਹੀਂ ਕੀਤਾ ਡੋਗਰੇ ਤੇ ਵਿਸ਼ਵਾਸ ਕੀਤਾ ਤੇ ਬੁੱਧੀ ਇਹਨੇ ਜਰਕੀ ਸੀ ਗੁਰੂ ਕੇ ਖਾਲਸੇ ਤੇ ਵਿਸ਼ਵਾਸ ਨਹੀਂ ਕੀਤਾ ਜੇ ਅਸੀਂ ਉਹਨੂੰ ਖਾਲਸਾ ਮੰਨੀਏ ਜਾਂ ਫਿਰ ਖਾਲਸਾ ਮੰਨਦਾ ਨਹੀਂ ਸੀ ਇਕਾਲੋ ਉਹਨਾਂ ਨੂੰ ਸਿੱਖ ਨਹੀਂ ਸੀ ਮੰਨਦਾ ਸੀ ਤੇ ਵਿਸ਼ਵਾਸ ਨਹੀਂ ਕੀਤਾ ਨਜੀਸੋ ਸਿੱਖ ਸਿੱਖ ਤੇ ਵਿਸ਼ਵਾਸ ਨਾ ਕਰੇਂ ਤੀ ਤੇ ਕਰੂਗਾ ਜੇ ਸਿੱਖ ਸੱਚ ਤੇ ਵਿਸ਼ਵਾਸ ਨਹੀਂ ਕਰਦਾ ਕੀ ਕਰੂਗਾ ਨਜੀਸੋ ਕਿਹਨੂੰ ਕੀਤਾ ਵਿਸ਼ਵਾਸ ਸਿੱਖ ਕੋਈ ਵੀ ਨਹੀਂ ਸੀ ਸਿੱਖ ਤਾਂ ਵਾਲੀ ਗੁੱਲਾ ਤੇ ਰੜਦੇ ਥੋੜੇ ਜਿਹਾ ਉਹ ਹਾਸ਼ੀਏ ਤੇ ਸੀਗਾ ਲੜਨ ਤਾਂ ਰਾਜ਼ੀ ਜਾਦੇ ਮੰਨਤਾ ਕਰਦੇ ਤੇ ਹੁਣ ਪੰਥ ਦਾ ਵਾਸਤਾ ਪੰਥ ਦਾ ਵਾਸਤਾ ਪਾਉਣਾ ਤੇ ਫਿਰ ਹੋਣਾ ਪੈਂਦਾ ਸੀ ਉਹ ਵਰਨਾ ਖਾਸ਼ੀ ਹੁੰਦੀ ਸੀ ਉਹ ਅੰਤ ਵਿੱਚ ਹੁਣ ਅੰਤ ਵਿੱਚ ਆਸ਼ੇ ਨਹੀਂ ਨਿਹੰਗ ਜਿੰਨਾਂ ਨੂੰ ਕਈ ਵਾਰੀ ਕਹਿੰਦੇ ਲੋੜ ਪੈਂਦੀ ਆ ਆ ਲੋੜ ਪੈਂਦੀ ਤੁਸੀਂ ਰਾਮ ਰਾਮ ਕਰਤਾ ਸਭ ਜਗ ਫਿਰੇ ਰਾਮ ਨਾ ਪਾਇਆ ਜਾਏ ਅਗਮ ਅਗੋਚਰ ਅਤਵਡਾ ਅਤੋਲਣ ਤੋਂ ਲਿਆ ਜਾਏ ਰਾਮ ਕਿਸੇ ਨੂੰ ਪ੍ਰਾਪਤ ਨਹੀਂ ਹੋਇਆ ਅਜੇ ਤੱਕ ਕੋਈ ਐ ਨਹੀਂ ਕਹਿ ਸਕਦਾ ਮੈਨੂੰ ਰਾਮ ਮਿਲ ਗਿਆ ਕਹੇ ਇੱਕ ਅਜੀ ਕਹਾਣੀ ਬਣਾਈ ਹੋਈ ਹੈ ਇਹਨਾਂ ਨੇ ਕੋਈ ਝੂਠ ਬੋਲ ਕੇ ਰਾਮਚੰਦਰ ਦੇ ਦਰਸ਼ਨ ਦੀ ਸਿਰਫ ਤੁਲਸੀ ਦਾ ਜੀ ਕਹਾਣੀ ਬਣਾਈ ਗਈ ਇਹ ਝੂਠ ਹੈ ਸਾਰਾ ਹੀ ਇਹ ਜੋ ਕਹਾਣੀਆਂ ਇੱਥੇ ਬਧਰੀਆਂ ਆਪਣੇ ਬਣਾਈ ਹੋਈਆਂ ਨੇ ਉਹ ਕਲੇਰਾਂ ਵਾਲਿਆਂ ਨੇ ਬਣਾਈ ਹੋਰ ਕਿਤੇ ਨਾਮ ਕੋਈ ਦਰਸ਼ਨ ਹੋ ਗਏ ਹੋ ਗਏ ਕੋਈ ਬਣਾ ਲੈ ਕੋਈ ਤਾਂ ਕਿਸੇ ਨੇ ਕਹਿਤਾ ਉਹ ਜੀ ਉੱਤੇ ਛੱਤਰ ਉੱਡ ਜਾਂਦਾ ਸੀਗਾ ਜਾਂ ਦਰਨ ਠੀਰਦੇ ਉਹ ਰੂ ਰੂ ਕਰਦਾ ਤਾਂ ਕੋਈ ਕੁਝ ਕੋਈ ਕੁਝ ਇਹੋ ਲੱਗ ਜਾਂਦਾ ਹੁਣ ਤੁਸੀਂ ਥੋੜੇ ਜਿ ਕੋਈ ਲੱਕੇ ਲਾ ਕੇ ਰਖੋ ਸਾਡੇ ਸਾਹਮਣੇ ਜਿਹੜੇ ਬੰਦੇ ਨੇ ਥੋੜੇ ਜਿ ਲੱਕੇ ਖਾ ਚੂੜ ਬੋਲਦੇ ਨੇ ਜਿੱਥੇ ਧਰਮ ਨਹੀਂ ਜਿੱਥੇ ਗਿਆਨ ਨਹੀਂ ਨਾ ਹੁੰਦਾ ਜੇ ਗਿਆਨ ਨਾ ਰਹੇ ਤਾਂ ਨਹੀਂ ਜਗਤ ਉੱਥੇ ਝੂਠ ਤੇ ਫਿਰ ਖੜਾ ਨਹੀਂ ਰਹਿ ਸਕਦਾ ਤਾਂ ਝੂਠਾ ਤਰੁੜ ਝੂਠ ਤੋਂ ਫਿਰ ਨਹੀਂ ਖੜਾ ਰਹਿ ਸਕਦਾ ਬਹੁਤ ਬੜਾ ਝੂਠ ਬੋਲਣਾ ਪੈਂਦਾ ਬਹੁਤ ਬੜਾ ਫਰਾਡ ਕਰਨਾ ਪੈਂਦਾ ਕਹਾਬੜੂ ਸਟੈਂਡ ਰੰਦਾ ਕਾਸ ਕਰੇ ਪੈਂਦਾ ਉਹ ਉਹਦੇ ਆਖਰੇ ਨਹੀਂ ਤਾਂ ਜਿੱਤ ਹੈ ਜਿੱਤੇ ਝੂਠ ਹੈ ਤੇ ਪਾਪ ਹੈ ਪਾਪ ਕੀ ਹੈ ਜਾਣਦੇ ਨੇ ਵੀ ਇਹ ਧਰਮ ਤੋਂ ਹੈ ਨਹੀਂ ਪਰ ਐਸੀ ਕਹਾਣੀ ਘੜਦੇ ਨੇ ਕਿ ਦੋਏ ਲੋਕ ਫਸ ਜਾਂਦੇ ਪੰਜਰਾ ਅਸੀਂ ਬਣਾ ਲਿਆ ਜੇ ਅਸੀਂ ਉਹ ਰੋਟੀ ਨਾ ਰੱਖੀਓ ਉਹਦੇ ਵਿੱਚ ਖਾਣ ਨੂੰ ਕੋਈ ਛੂਹ ਨਹੀਂ ਫਰਦਾ ਨਹੀਂ ਬਾਬਾ ਕੱਲੇ ਬੰਜਰੇ ਦੀ ਗੱਲ ਜੇ ਉਹਦੇ ਕੋਲ ਆਲਚ ਦੇਵਾਂਗੇ ਖਾਣ ਨੂੰ ਰੱਖਾਂਗੇ ਤਾਂ ਛੂਹ ਫਰਦਾ 14 ਹਜ਼ਾਰ ਫਰਦਾ ਉੱਤੇ ਲੜਕੀ ਤੇ ਦਾਣੇ ਘਣਾਈ ਨੇ ਪਾੜੀ ਰੱਖਿਆ ਹੋਇਆ ਨੜਕੀ ਰੱਖੀ ਹੋਈ ਹੈ ਜੇ 2 ਦਿਨਾਂ ਅগে ਉੱਤੇ ਲੜਕੀ ਤੇ ਪਹਿਲੇ ਨੜਕੀ ਖੁੱਬ ਜਾਂਦੀ ਆਣੇ ਪਾਣੀ ਤੋਂ ਪਹਿਲੇ ਪਹਿਲੇ ਉਲਟਾ ਹੋ ਜਾਂਦਾ ਰਾਮ ਆਪੇ ਉਲਟਾ ਹੋ ਜਾਂਦਾ ਜਿਉਂ ਨਰਲੀ ਪ੍ਰਭੂ ਸੂਆ ਸੂਟਾ ਜਦੋਂ ਪਰ ਵਿੱਚ ਪੁੱਠਾ ਹੋ ਜਾਂਦਾ ਇਹ ਪੁੱਠੀ ਵੱਟ ਕਰ ਦਿੰਦੇ ਨੇ ਸਾਰੀ ਇੱਡੇ ਛਾਤਰ ਦਵਾ ਦੇ ਤੇ ਸੂਆ ਇਹਨਾਂ ਨੂੰ ਕਿਆ ਆਵੇ ਲੋਟਾੜੇ ਹਾਂ ਹਾਂ ਸੋ ਜੋ ਪਿੰਜਰੇ ਚ ਰੋਟੀਆਂ ਪਾਈ ਜਿਹੜੀ ਕਹਾਣੀਆਂ ਜੁੜੀਆਂ ਨੇ ਨਾਲ ਰੋਟੀ ਹੋਈ ਐ ਲਾਲ ਹੈ ਹੋ ਗਿਆ ਸਮ ਗਿਆ ਉਹ ਪਿੰਜਰੇ ਚ ਰੋਟੀ ਹੋਈ ਰੋਟੀ ਪਾਈ ਹੋਈ ਹੈ ਪਾਪ ਲੈ ਕੇ ਇਹਨੂੰ ਅਸੀਂ ਚੱਲਣ ਨਹੀਂ ਦੇਣਾ ਤੁਹਾਨੂੰ ਪਤਾ ਨਹੀਂ ਇਸ ਦਾ ਫਾਇਦਾ ਉਹਨਾਂ ਕੋਲ ਪਤਾ ਲੱਗਦਾ ਕੀ ਗੱਲ ਸੀ ਇਹ ਕਿੱਡਾ ਬੜਾ ਧਰੋਹ ਕੀਤਾ ਉਹਨਾਂ ਨੇ ਫਿਰ ਪਤਾ ਇਹਨਾਂ ਨੂੰ ਵੀ ਸੀ ਜਿਨ੍ਹਾਂ ਨੇ ਬਣਾਇਆ ਨਾ ਉਦੋਂ ਰਹਿਦ ਮਰੇ ਦਾ ਪਤਾ ਉਹਨਾਂ ਨੂੰ ਵੀ ਸੀ ਪਰ ਅੰਦਰੋਂ ਤਾਂ ਉਹ ਵੀ ਸਹਿਕ ਨਹੀਂ ਸੀ ਇਹ ਸੇਖੋਂ ਦੇ ਤਾਂ ਜਿੱਥੇ ਜਿਹੜੇ ਭੇਜੇ ਨੇ ਅਸਲੀ ਆਦਮੀ ਆ ਪਿੱਛੇ ਰਹਿ ਗਿਆ ਜਿੱਥੇ ਘਰੋਂ ਭੇਜਤਾ ਦੇ ਵੀ ਕਰਦੇ ਰਹੇ ਨੇ ਇਹ ਬਿਛੜਾ ਦੇ ਉਹ ਬੰਦੇ ਜਿੱਥਾ ਨੂੰ ਢੀਰ ਤੋਂ ਦਾ ਮੂਰੇ ਭੇਜਦਾ ਫਿਛੜਿਆ ਗਿਆ ਰਹਿ ਗਿਆ ਫਿਰ ਇਹ ਕਰਦੇ ਨੇ ਉਹ ਇਹ ਕਹਿੰਦੇ ਨੇ ਜਿਹਨਾਂ ਦਾ ਬੰਦੇ ਭੇਜੇ ਨੇ ਤੁਸੀਂ ਕਹ ਲਓ ਮੈਂ ਹੁਣ ਜਾਲੂਗੋੜ ਜਲਗੀ ਜਨ ਕੀ ਦੋਗੇ ਉਹ ਤਾਂ ਪਲਾਨ ਪ੍ਰੋਗਰਾਮ ਸੀ ਹਾਈਲਾਈਟ ਹੋਣਾ ਸੀ ਉਹਨੇ ਆ ਬੰਦੇ ਕੋਈ ਹੋਰ ਭਰਵਾਉਣੇ ਸੀ ਜਾ ਬੂਰੇ ਜਾਂਦਾ ਆਪਣੇ ਕੋਲ ਹੀ ਲੱਗ ਜਾਂਦੀ ਇਹ ਸਭ ਜੋ ਕੁਝ ਹੈ ਸਭ ਸਿੱਖਿਰੇ ਤਰੋ ਹੈ ਰਾਜਨੀਤੀ ਵਾਲੀ ਸਾਕਸੀ ਜੇ ਜੋੜੀ ਗਈ ਗੁਰੂ ਘਰ ਦਾ ਬਹੁਤ ਵਿਰੋਧ ਕੀਤਾ ਵਿੱਚ ਜਿਹੜਾ ਵਿਰੋਧ ਕਰਨੇ ਵਾਲਾ ਸਾਲਸਾ ਸੀ ਉਹ ਹਾਸ਼ੀਅਤ ਕਰਤਾ ਲੋਕਾਂ ਨੇ ਜਿਹੜੀ ਐਸਬਗ ਸੰਗਤ ਹੈ ਨਾ ਸਾਰੀ ਇਹ ਸਾਰੀ ਸਨਾਤਨ ਸੰਗਤ ਸੀ ਸੂਯੋ ਜਨਾਦਨੀ ਸੰਬਦ ਸਾਰੀ ਗੁਰੂਆਂ ਕਿੰਨੇ ਲੋਕ ਸੀ ਯਾ ਇਹ ਨਹੀਂ ਸਕਤ ਹੁੰਦੀ ਇਹਨਾਂ ਨੂੰ ਤੇੜ ਨਹੀਂ ਸੀ ਜਾਣਾ ਪੈਂਦਾ ਕੀ ਕਰ ਜਾਣਾ ਸੀ ਵੈਸੇ ਜੇ ਗੱਲ ਹੈ ਜੇ ਛੱਤ ਨਾਲ ਲੱਗ ਵੀ ਜਾਂਦਾ ਹੋਵੇ ਕੀ ਪ੍ਰਾਪਤੀ ਹੈ ਲੱਗ ਵੀ ਗਿਆ ਜাদুਗਰਾਂ ਨਾਲ ਜਵਾਖ ਗਹਿਵਗਾ ਦੱਸੇ ਬੰਦਾ ਉਹ ਜਾਦੂਗਰ ਇਹਨਾਂ ਕੁਝ ਕਰਦੇ ਲੁਕੀ ਮੰਗੇ ਤੇਰੇ ਬਾਅਦ ਚਾਲੂ ਨਾ ਲੁੱਦੇ ਰਿਓ 10 10 ਪੈਸੇ ਇੰਨੀ ਵੈਲੀ ਹੋਵੇ ਦੱਸੋ ਦੀ ਅਨਾਂ ਜਿਹੜਾ ਰਾਮ ਨਾ ਪਾਇਆ ਜਾਏ ਇਹ ਛੱਡ ਦਿੱਤਾ ਗੁਰਬਾਣੀ ਦਾ ਕਹਿੰਦੀ ਰਾਮ ਨਾ ਪਾਇਆ ਜਾਏ ਰਾਮ ਨਾਮ ਹੋਰ ਮੈਂ ਗਹਿਵ ਜਾ ਕੇ ਕੋਈ ਆਖਰੀ ਗੱਲ ਹੈ ਐਂਡ ਵਿੱਚ ਜੋ ਕੁਛ ਮਰਜੀ ਕਰ ਜਿਹੜੀ ਆਖਰੀ ਜਿੱਥੇ ਜਾ ਕੇ ਗੱਲ ਮੁਕਦੀ ਹੈ ਤੋੜਦੀ ਹੁੰਦੀ ਹੈ ਨਾ ਉਹ ਸਿੱਟਾ ਹੁੰਦਾ ਹੈ ਰੋ ਉੱਥੇ ਰਾਮ ਨਾਮਾ ਵੈਗਰੂ ਨਾਮ ਕਿੱਥੇ ਉੱਥੇ ਨਾਮੇ ਬਾਦਸ਼ਾਹ ਆਖਰੀ ਬਾਦਸ਼ਾਹ ਜਾ ਕੇ ਬਰਾਬਰ ਕੋਈ ਨਹੀਂ ਤੁਸੀਂ ਵੈਗਰੂ ਨੂੰ ਕਿਵੇਂ ਢਾ ਲਿਆ ਵਿੱਚੋਂ ਅ ਨੂੰ ਨਾਮ ਨਹੀਂ ਕਿਹਾਇਆ ਕਿਤੇ ਕਿੱਥੇ ਕਿਹਾ ਹੈ ਗੁਰਬੰਦਰ ਕਿਹਾ ਤੁਸੀਂ ਉਹਨੂੰ ਨਾਮ ਕਿਵੇਂ ਕਹਿੰਦਾ ਉੱਥੇ ਤਾਂ ਗੁਰਮੁੰਤਰ ਨੇ ਆਰਾਮ ਦੇ ਨਾਮ ਲੱਗ ਗਿਆ ਨਾਮ ਨਾਮ ਵੈਗਰੂ ਗੁਰਮੁੰਤਰ ਹੈ ਗੁਰਮੁੰਤਰ ਨੂੰ ਨਾਮ ਕਿਵੇਂ ਬਣਾ ਲਿਆ ਫਿਰ ਮੰਤਰ ਨੇ ਮੇ ਨ ਜੰਤਰਵੇਂ ਨ ਤੰਤਰਵੇਂ ਜੰਤਰਵੇਂ ਮੰਤਰਵੇਂ ਨ ਜੰਤਰਵੇਂ ਨ ਗੁਰਬਾਣੀ ਹੈ ਉਹ ਕੋਲੋਂ ਗੱਲਾਂ ਬਣਾਈਆਂ ਨੇ ਉਹਨਾਂ ਨੇ ਜੇ ਸੱਚ ਨਹੀਂ ਤਾਂ ਉੱਥੇ ਗਿਆਨ ਨਹੀਂ ਜੇ ਗਿਆਨ ਤਹਿ ਧਰਮ ਹੈ ਗੁਰਬਾਣੀ ਦਾ ਗਿਆਨ ਗੁਰਬਾਣੀ ਦੀ ਸੋਚੀ ਗੁਰਬਾਣੀ ਕੀ ਕਹਿੰਦੀ ਹੈ ਸਾਨੂੰ ਅਸੀਂ ਕੀ ਕਰਦੇ ਜੇ ਇਹ ਗੱਲ ਹੈ ਜੀ ਨਾ ਉੱਥੇ ਝੂਠ ਕੋਲੋਂ ਕੱਢ ਗਏ ਉਹ ਫਿਰ ਕਿਉਂ ਇਹਨੂੰ ਲਈ ਹੋ ਉਹਨਾਂ ਨੇ ਅਸਲ ਕਿ ਇਹਦਾ ਬਰੋਡ ਹੈ ਜੇ ਝੂਠ ਦਾ ਪਾਪ ਵਾਪਰੇ ਪਾਪੀ ਕਰਮ ਮਾਹਮਾ ਕਰਦੇ ਹਾਇ ਉਹ ਪਹਿਲਾਂ ਇਥੋਂ ਸ਼ੁਰੂ ਹੋਇਆ ਕਰਦੇ ਹਾਇ ਦਾਨ ਕੇ ਜੋ ਮਥਲ ਬਧਾਣੀਆਂ ਤੋ ਮਥਾ ਧਰਵਾਏ ਅਗਨਕਸ਼ਾ ਵੀ ਦੇ ਇਹ ਲਹਿਰ ਦਮ ਤੋੜ ਰਹੀ ਹੈ ਹੁਣ ਅ ਤਮ ਤੋੜ ਦੂਗੀ ਭਾਵੇਂ ਟੈਲੀਵਿਜ਼ਨ ਤੇ ਜੋ ਮਰਜੀ ਕਰੀ ਜਾਓ ਦੇਖਣ ਵਾਇਰਲ ਵਾਇਰਲ ਕਰਦੇ ਪਬਲਿਕ ਐ ਸਭ ਜਾਣਦੀ ਹੈ ਤੁਹਾਡਾ ਅਚਨ ਕਰਿਆ ਤੁਹਾਡੇ ਕੋ ਗਿਆਨ ਕਿਹਾ ਤੁਹਾਡੀ ਸੋਚ ਕੀ ਹੈ ਜਾਣਦੀ ਨਹੀਂ ਪਬਲਿਕ ਕੀ ਗੱਲ ਹੋ ਤੱਕ ਨਹੀਂ ਅਸੀਂ ਕੀ ਸਾਡੀ ਸੋਚ ਹੈ ਕੀ ਸਾਡਾ ਵਿਹਾਰ ਹੈ ਪਬਲਿਕ ਦੇ ਵਿੱਚ ਜਾਣਦੀ ਨਹੀਂ ਕੋਈ ਮਰਕ ਨਹੀਂ ਪੈਣਾ ਹਾਂ ਇਹ ਤਾਂ ਇੱਕ ਉਹ ਸਾਧਨ ਦੇ ਅਸੀਂ ਬਣਾਏ ਜਿਵੇਂ ਐਡਾ ਜਿਹੜਾ ਸਾਧਨ ਐਡ ਅਵੇਜਾ ਛੁੱਟਦੀ ਹੁੰਦੀ ਹੈ ਜਾਨਾ ਸੱਚ ਨੂੰ ਹੈਡ ਦੇਣ ਦੀ ਲੋੜ ਨਹੀਂ ਕਿਤੇ ਸੱਚ ਕਾਲ ਵੇੜਦੂ ਹੈ ਤਾਂ ਸੱਚ ਹੁੰਦਾ ਹੀ ਹੈ ਅਗਮ ਅਗੋਚਰ ਅਤ ਨ ਕਿਸੇ ਨੂੰ ਰਾਮ ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ ਰਾਮ ਨਾਮ ਦੀ ਪ੍ਰਾਪਤੀ ਭਗਤਾਂ ਨੂੰ ਹੋਈ ਹੈ ਰਾਮ ਨਾਮ ਕਿੱਥੇ ਹੁੰਦਾ ਹੈ ਕਿਹਾ ਹੁੰਦਾ ਰਾਮ ਨਾਮ ਉਰਮੈ राम नाम शब्द दे हृदय च गहे ओ फड़ लो लो तो जाके सम्नि खवे जाके सम्नि तो सब कब के सब कट राम बोल यार काट और हृदय कोई गल है राम नाम और दे विच है सब कट राम बोलदा जो तो ध्यान लाने अंदर बैठ जा लो गया ਗੁਰਕੀ ਸ਼ਾਣੂ ਚਲੇ ਜਾਓ ਗੁਰਕੇ ਚਰਨ ਪਰਸਰੋ ਜਾ ਕੇ ਉਥੋਂ ਲੈ ਲੋ ਇਹਦੇ ਬਰਾਬਰ ਕੁਛ ਵੀ ਨੀ ਸੰਸਾਰ ਚ ਗੁਰਮਤਿ ਦੇ ਉੱਪਰ ਦੀ ਕੁਛ ਨੀ ਸੰਸਾਰ ਚ ਸਾਨੂੰ ਦੀ ਕੁਛ ਜਿਹਾ ਲੱਗਦਾ ਹੈ ਤੇ ਸਾਡੀ ਅੱਖਾਂ ਨੂੰ ਧੋਖਾ ਦਿੰਦਾ ਹੈ ਅੱਖਾਂ ਇਹ ਅੱਖਾਂ ਇਸਾ ਨੂੰ ਫੈਲਾ ਕਰਦੀ ਤੇ ਸਾਡਾ ਦੁਸ਼ਮਣ ਵੀ ਬਹੁਤ ਵੱਡੀ ਕਰਦੀ ਉਹ ਠੋਖਾ ਵੀ ਇਹ ਨਾਲੇ ਖਾਨੇ ਸੀ ਰਸੀ ਨੂੰ ਸਭ ਵੀ ਇਹ ਰੱਖਾਂ ਦੀ ਗਲਤੀ ਨਾਲ ਮੰਨ ਲਿਆ ਸੀ ਜਿਆ ਰਸੀ ਤਾਂ ਠੋਖਾ ਐਸੇ ਅਖਦਾ ਹੁੰਦਾ ਰਸੀ ਨੂੰ ਸਭ ਮੰਨ ਲਿਆ ਸੱਪ ਨੂੰ ਰਸੀ ਮੰਨ ਲਿਆ ਯਾਰਂ ਡਰੇ ਤੋ ਦੇ ਸੰਸਰ ਨੇ ਏਨਾ ਦਾ ਧੋਖਾ ਸਾਨੂੰ ਮਾਇਆ ਵਾਈ ਮਾਇਆ ਛੜ ਜੋ ਦੀਸੇ ਸੋ ਮਾਇਆ ਵਾਈ ਜੋ ਦੀਸੇ ਸਾਰਾ ਛੜਾ ਹੈ ਇਹ ਸਾਰਾ ਛੜਾ ਵੈ ਪਰ ਅੱਖ ਲਈ ਛੜਾਵਾ ਨਹੀਂ ਬਣਿਆ ਧੋਖਾ ਕਰੇ ਆਪਣੀ ਜਿਹੜਾ ਅੱਖ ਮੰਦੀਏ ਸੱਚ ਗੁਰਬਾਣੀ ਕਹਿੰਦੀ ਆ ਵਾਈ ਮਾਇਆ ਛੜ ਕਹਿੰਦੇ ਯਾਰ ਇਹ ਜੇ ਸੱਚ ਇਹ ਗੱਲ ਹੈ ਕਿ ਛੜਾ ਹੈ ਇਹ ਸੱਚ ਹੈ ਕਰ ਜਾਂਦਾ ਜੇ ਸੱਚ ਕਰ ਜਾਂਦਾ ਜੇ ਛੜ ਬਣਿਆ ਨਹੀਂ ਜਿੱਦਣ ਅਸੀਂ ਛੜ ਬਣ ਲਿਆ ਉਦੋਂ ਅਸੀਂ ਪਹਿਲੀ ਗੱਲ ਹੋਰ ਬਣਦੀ ਮੰਦੀ ਅਜੋ ਦਾ ਸਬਰ ਜੋ ਹੋਰ ਹੈ ਉਹਦੇ ਬਾਅਦ ਅਸੀਂ ਫੈਸਲਾ ਕਰਾਂਗੇ ਕਿ ਗੁਰਬਾਨੀ ਤੇ ਤੁਰਨਾ ਹੈ ਜਾਂ ਨਹੀਂ ਤੁਰਨਾ ਬੰਦੇ ਨੂੰ ਛੱਡ ਮੰਨੋ ਜਿੰਨਾ ਜਣੇ ਨੂੰ ਛੱਡ ਨਹੀਂ ਮੰਨਦੇ ਗੁਰਬਾਨੀ ਤੇ ਸੋਚ ਵੀ ਨਹੀਂ ਸਕਦੇ ਗੱਲ ਸੋਚਾਂਗੇ ਜਾਂ ਛੱਡ ਬੰਦਾਂਗੇ ਜਦ ਬੰਦੇ ਨੂੰ ਅਸੀਂ ਝੂਠਾ ਵਾਲੇ ਬੰਦਾ ਝੂਠਾ ਤਾਂ ਉਹਦੀ ਸਭ ਪਹਿਲੇ ਛੱਡ ਦੋਗੇ ਜਿੰਨਾ ਜਰ ਤੁਹਾਨੂੰ ਭਰੋਸਾ ਵੀ ਬੰਦਾ ਆਪਣੇ ਕੰਮ ਦਾ ਹੈ ਤੁਸੀਂ ਛੱਡ ਨਹੀਂ ਸਕਦੇ ਜਾ ਤੁਸੀਂ ਮੰਨੋਗੇ ਵੀ ਇਹ ਬੰਦਾ ਹੀ ਮਰਵਾਊਗਾ ਆਪਾਂ ਜਿਹੜਾ ਆਪਣੀ ਪਾਰਟੀ ਕਾ ਗਿਆ ਜਦੋਂ ਛੱਡ ਦੋ ਇਹ ਬੰਦਾ ਹੈ ਕਿ ਮਾਈ-ਬਾਇਆ है ਹੈ ਕਿ ਆ ਜੋ ਦਿੱਸੇ ਸੋ ਸਾਰਾ ਮਾਇਆ ਮਾਇਆ ਸੱਚ ਦੋਹਾਂ ਜਿਹੜੇ ਦਨ ਛੜ ਮੰਨ ਲਿਆ ਉਸ ਦਿਨ ਇਹ ਵਿਚਾਰ ਹੋ ਗਿਆ ਹਰਦੋਦ ਬਕਰ ਤੇ ਜੋ ਬਸਰ ਪਰ ਬਜੂ ਉਹਦਨ ਜਦਨ ਛੜ ਮੰਨਦਾ ਜਿੰਨਾ ਜਦ ਛੜ ਨਹੀਂ ਮੰਨਦੇ ਬਾਕੀ ਸਭ ਗੱਲਾਂ ਫਜ਼ੂਲ ਨੇ ਇੱਥੇ ਫੈਸਲਾ ਕਰ ਲੋ ਇੱਕ ਪੰਕਤੀ ਤੋਂ ਫੈਸਲਾ ਕਰ ਲੋ ਕਿ ਛੜਾ ਤਾਂ ਆਪਣੇ ਆਪ ਨੂੰ ਪੀਜਾ ਹੋਇਆ ਤੇ ਜੇ ਨਹੀਂ ਛੜਾ ਫਿਰ ਬਸਰ ਬੱਕੀ ਖਾਇਦੇ ਨੇ ਖਾਇਦੇ ਤੇ ਉਥੇ ਰਹਿ ਜਾਂਦੇ ਸੀਰਾ ਕਹਿੰਦੇ ਮੈਨੂੰ ਉਹ ਕਹਿੰਦੇ ਮੈਨੂੰ ਸੀਰਾ ਮਿਲ ਗਿਆ ਉਹ ਕਹਿੰਦੇ ਮੈਨੂੰ ਅੱਖੀਂ ਜਿਹੜਾ ਸੀਰਾ ਖਾਦਾ ਉਹ ਵੀ ਮੱਖੀ ਦੇ ਵਿੱਚ ਹੀ ਜਾਂ ਮੱਖੀ ਚ ਡੁੱਬ ਜਾਂਦੀ ਹੋਰ ਵੱਜ ਜਾਂਦਾ ਸੀਰਾ ਤਾਂ ਬੰਦ ਘਟਦਾ ਸੀਰਾ ਲੱਗਦਾ ਸੀਰਾ ਬੰਦ ਹੈ ਵਿੱਚ ਰਹਿ ਜਾਂਦੀ ਬੱਸ ਆਈ ਵਰਤ ਬਾਇ ਜੇ ਨਹੀਂ ਇਕੱਠੀ ਕੀਤੀ ਉਥੇ ਰਹਿ ਜੁਣੀ ਲੇ ਕੇ ਕੋ ਜਾਂਦੇ ਸੀਰਾ ਲੈ ਕੇ ਉੱਡ ਜਾਂਦੀ ਸੀਰਾ ਬਾਹਰ ਮੈਂ ਉਹ ਦਰਦਰ ਤੋ ਲੈ ਜਾਣ ਨੂੰ ਕੁਛ ਨਹੀਂ ਹੈ ਵੱਖ ਕੀ ਹਰ ਸੀਰੇ ਦੀ ਗੱਲ ਸਰੀਰ ਵੀ ਇੱਥੇ ਰਹਿ ਜਾਣਾ ਸਰੀਰ ਤੇ ਨਾਲੇ ਬੈਠੋ ਤਾਂ ਹੀ ਦੀ ਸੀਰੇ ਤਾਂ ਬਚ ਰਹੇ ਸੀਰੇ ਤਾਂ ਬਚ ਕੇ ਬਚ ਕੇ ਖਾਵੇ ਜੀਰਾ ਖਣ ਭਾਈ ਮਾਇਆ ਸਮਝ ਕੇ ਜੀਰਾ ਛਾਲਾ ਕੋਈ ਗੱਲ ਨਹੀਂ ਸਾਰੀਆਂ ਮੁੱਖੇ ਤਾਂ ਨਹੀਂ ਮਰਦੀਆਂ ਵਿੱਚ ਬਾਹਰ کئی ਕਿਨਾਰੇ ਬੈਠ ਖਾਵੇ ਬਚਾ ਕੇ ਵਰਤੇ ਉਹ ਛੱਡ ਦੋ ਵੱਜ ਜਾਂਦਾ ਜਿਹੜਾ ਛੱਡ ਨੂੰ ਸਮਝ ਕੇ ਵਰਤੇ ਬਣਾਇਆ ਚ ਗੁਰਮੁਖ ਮਾਇਆ ਦਾਸੀ ਅੰਨਾ ਸੰਗਲ ਫੜਕੇ ਵੀ ਸਰੋਵਰ ਚ ਨਾਉਣ ਵਾਲੇ ਹੁੰਦੇ ਨੇ ਉਹਨਾਂ ਕੀ ਜਾਣਦੇ ਜਿੱਥੇ ਸੰਗਲ ਜਾਂਦਾ ਸੰਗਲ ਦੀ ਛੜ ਰਾਮ ਹੈ ਅਗਮ ਹੈ ਬੁੱਧੀ ਤੋਂ ਪਰੇ ਹੈ ਬਰਾਜ ਚੰਦਰ ਦੀ 卢ਕੀ ਬੁੱਧੀ ਤੋਂ ਬੁੱਧੀ ਹੁੰਦਾ 卢ਕੀ ਬੁੱਧੀ ਤੋਂ ਜਾਣ ਪਰੇ ਹੋ ਜਾਂਦਾ ਰਾਮ ਜੇ ਕਹਿੰਦਾ ਨਾ ਜਾਂਦਾ ਨਾ ਮਰਦਾ ਫੇਰ ਉਹਦੇ ਯਾਰ ਕਿਹੜਾ ਰੰਗ ਹੋਇਆ ਨਾ ਜਦੋਂ ਪੂਰੋਗਮ ਬੰਦ ਹੈ ਰੰਗ ਬੜਾ ਹੁੰਦਾ ਜਨਮ ਮਰਨ ਦੋਵੇਂ ਮੈਨੇ ਫੇਰ ਉਹ ਲੋ ਚੱਕਰ ਦੇਖ ਰਹੇ ਹਾਂ ਸਾਰਾ ਵੀ ਆ ਵੀ ਵੀ ਉਹਦਾ ਬਾਬ ਦਾ ਫਰਦ ਗੁਰਬਾਣੀ ਨੇ ਕਹਤਾ ਪਗਮੋਗੋ ਚਰਾਤ ਵੱਡਾ ਉਹ ਤੁਲਣਾ ਸੁਣਿਆ ਜਾਏ RAM ਦਾ ਨਾਮ ਜਿਹੜਾ ਇਹ RAM ਜੋ ਸਾਡਾ ਵਜੂਦ ਆ ਆਤਮਾ ਦਾ ਆਤਮਾ ਦਾ ਗਿਆ ਦਾਇਰਾ ਕਿੰਨਾ ਆਤਮਾ ਕਿੰਨੀ ਵੱਡੀ ਹੋ ਜਾਂਦੀ ਹੈ ਜੈਸੇ ਤਾਰ ਉੱਪਰ ਜਿੱਤੇ ਤੱਕ ਮਾਇਆ ਉੱਤੇ ਤੱਕ ਆਤਮਾ ਮਾਇਆ ਤੋਂ ਪਰੇ ਰਹਉਂ ਮੈਂ ਫਿਰ ਜੇ ਆਤਮਾ ਦੇ ਅੱਗੇ ਕੇ ਪਰਮਾਤਮਾ ਦੇ ਵਿੱਚ ਹੈ ਨਾ ਜਿਹਨਾਂ ਸੋਚ ਭਰਮ ਨੇ ਉਹਨੇ ਸੋਚ ਇਹ ਹੈ ਫੈਲਣਾ ਕੀਮਤ ਕਦੇ ਨਾ ਪਾਈ ਆ ਕਿਤੇ ਨਾ ਲਿਆ ਜਾਏ ਇਸ ਕਰਕੇ ਇੰਨਾ ਬੜਾ ਅਤੁੱਲ ਹੈ ਇਹ ਗਿਆਨ ਦੀ ਇਹਦੀ ਕੀਮਤ ਨਹੀਂ ਪੈ ਕੀਮਤ ਕਾਦੇ ਨਾ ਪਊਗੀ ਪਰ ਕੀ ਬਤਾਪਾ ਮਾਇਆ ਦੀ ਉਹ ਪਾਵਣ ਦੀ ਹੈ ਵਾਇਰ ਲੋਹੇ ਬੈਲਾ ਕੀਤੀ ਹੈ ਇੱਕ ਮਹੀਰਾਂ ਨੋਟ ਬਣਾਉਦੀ ਹੈ ਕਾਹ ਇੱਕ ਬਾਦ ਹੋ ਤਾਂ 50000 ਦਾ ਨੋਟ ਘੜ ਦਿੰਦੀ ਹੈ ਫਿਰ ਉਹ ਵੇਚਾ ਕਿੰਨੇ ਦੀ ਉਹ ਵੇਚਣ ਲਈ ਦਈ ਜਾ ਉਮ ਜੀ ਇਹ ਨਾ ਨੋਡਰ ਨਾਲ ਵੀ ਹੀਦਾ ਕੋ ਮਰੋਣੀ ਕਿੰਨੇ ਦੇ ਵਿੱਚ ਹੋ ਗਏ ਉਹ ਕੀ ਮੰਗਦੇ ਐ ਉਹ ਰੋਟਾ ਨਾਲ ਦੀ ਕੀਮਤ ਕਿੰਨੇ ਪਾਉਗੇ ਹੋਈ ਜੀ ਉਹ ਕਹਿੰਦਾ ਕਿੰਨੇ ਦੀ ਮਸ਼ੀਨ ਆਖੇ ਦੀ ਕਹਿੰਦਾ ਲੈ ਮੈਨੂੰ ਜਦੋਂ ਕਹਿੰਦਾ ਕਹਿੰਦਾ 100 ਰੁਪਏ ਅਦੋਂ ਦੇਦਾ ਸਿੰਘ ਜੀ ਨੇ ਉਹਨੇ ਬਣਾ ਕੇ ਦੇਣਾ ਕਹਿੰਦਾ ਐ ਨਹੀਂ ਕਰਦੀ ਜੀ ਜਦੋਂ ਉਹਦੇ ਨਾਲੇ ਉਹਨੇ 100 ਦਾ ਰੋਡ ਬਣਾਇਆ ਤੇ ਉਹਦੀ 100 ਰੁਪਏ ਕੀਮਤ ਕਿਵੇਂ ਹੋਊਗੀ ਅਸਲ ਜਿਹੜੇ ਆਮ ਦੀ ਕੀਮਤ ਪੈ ਜਾਂਦੀ ਹੈ ਨਾ ਜਿਹੜਾ ਆਮ ਸੰਸਾਰੀ ਪਦਾਰਥਾਂ ਨਾਲ ਖੁਸ਼ ਹੋ ਜਾਂਦਾ ਔਰ ਆਬ ਨਹੀਂ ਹੈ ਉਹਦੀ ਕੀਮਤ ਪੈਗੀ ਰਾਮ ਦਾ ਮੁੱਲ ਕੀ ਹੈ ਮੰਨ ਦੇ ਰਾਮ ਮਨ ਵੀ ਉਹਨੇ ਨਹੀਂ ਪਾਇਦਾ ਜੀ ਮਨ ਵੀ ਕੀਮਤੀ ਕੀਮਤੀ ਕਿਉਂਦੀ ਜੋਤ ਹੈ ਵੀ ਜਦੋਂ ਕੋਈ ਕੱਢਾ ਹੀ ਰਾਜਾ ਹੋਵੇ ਜਦੋਂ ਉਹਦੀ ਗੱਲ ਹੁੰਦੀ ਹੈ ਮਰ ਮੌਤ ਦੀ ਪਹਿਲਾਂ ਬਲਕੇ ਸਰੀਰ ਦੀ ਕੀਮਤ ਹੈ ਉਹਦੀ ਵੀ ਕੀਮਤ ਹੋ ਜਾਂਦੀ ਹੈ ਸਾਰਾ ਸੰਸਾਰ ਦਾ ਰਾਜ ਦੇ ਦਿੰਦੇ ਸਰੀਰ ਦਾ ਦਮਰੇ ਜੀ ਛੱਡ ਤੂੰ ਆਤਮਾ ਨੂੰ ਵੀ ਛੱਡ ਸੁਆਸ ਬੰਦੀ ਕੀਮਤ ਆਤਮਾ ਤੇ ਕਿਸ ਨੂੰ ਚਾਹੀਦੀ ਉਹ ਨਹੀਂ ਕੀ ਕਰਨੀ ਕਿਸੇ ਨੇ ਆਪ ਬੁਰਾ ਰੱਤ ਦਾ ਕੰਮ ਨਹੀਂ ਕੀ ਬੁਰਾ ਨਸੋ ਆਤਮਾ ਦਾ ਕੋਈ ਜੇਤੀ ਮੰਗਦਾ ਨਹੀਂ ਕਤਲ ਕਰਕੇ ਜਾਇਦਾਦ ਵੰਡਦੀ ਕਤਲ ਵੀ ਤਾਨੋਦਾ ਵੰਦਾ ਉਹਦੇ ਪੈਸੇ ਵਾਸਤੇ ਕਰਦਾ ਰੱਤਵ ਦੇ ਕਿਲਰ ਜਿੱਧਰ ਮਰਜੀ ਜਾਵੇ ਉਹ ਤਾਂ ਇਹ ਦੇਖਦਾ ਸਿਰ ਰਤਨਾ ਆਤਮਾ ਨੇ ਵਿਛਦਾ ਨਹੀਂ ਕਤਲ ਖਤਰਾ ਦਾ ਸਹੀ ਤਾਂ ਉਹਨੂੰ ਆਤਮਾ ਤੋਂ ਕੀ ਖਤਰਾ ਹੋਰ ਦਾ ਸਹੀ ਜਿਹੜਾ ਮਨ ਵੀ ਹੈ ਆਪ ਨੇ ਨਹੀਂ हां हां ਕੀਤਾ ਤੇ ਉਹ ਦਿਨ ਉਹ ਤੜਾ ਕੀਤਾ ਫਿਲਮ ਦੇ ਖੋਜ ਉਹਨਾਂ ਨੂੰ ਉਹ ਆ ਕੀ ਹੋ ਗਿਆ ਉਹ ਤੇ ਮਨ ਆ ਕੀਆ ਤੋਂ ਬਰਾਂਤ ਨਾ ਫਿਰ 라ਉਂਗਾ ਘਰ ਕੀ ਜਾਂਦਾ ਇਹ ਦੇ ਤੂੰ ਮੇਰਾ ਹੋ ਰਹਿ ਉਹ ਨਹੀਂ ਗਿਆ ਨਾ ਪਿਓ ਤੋਂ ਪੁੱਤ ਭਗੀ ਹੋ ਗਿਆ ਇਸ ਐ ਐ ਤਰੀਕੇ ਨਾਲ ਪਸੰਦ ਲੈ ਤੇ ਉਹਨੇ ਤਾਂ ਪੁੱਤ ਪਹਿਲੇ ਦੇ ਪਿਓ ਹਾਂ ਹੋ ਗਿਆ ਬਾਕੀ ਹੋ ਗਿਆ ਹੋ ਗਿਆ ਦੁਸ਼ਮਣ ਫਿਰ ਜਾਗਦਾ ਇਹੀ ਹੈ RAM ਦਾ ਜਗ ਤੇ ਪਰੇ ਬੈਠਾ ਜਾਗਣਾ RAM ਦਾ ਤਾਂ ਕੋਈ ਸਮਝ ਜੱਗ ਦੇ ਪਰ ਜੱਗ ਦੇ ਅਰਥ ਸਰੀਰ ਕਰਕੇ ਚੱਲੇ ਸੀ ਸਾਰਾ ਜਾਗਾ ਜੀ ਗੁਰਬਾਣੀ ਨੂੰ ਸਾਰਾ ਜਾਗਤ ਤੇਰੀ ਇਜ਼ਤ ਦੀ ਗੁਰਬਾਣੀ ਦੀ ਸੰਗ ਦੀ ਜਿਹੜੇ ਤੈਨੂੰ ਤੇਰੇ ਹੀ ਨੇ ਅਸਲ ਹੈ ਸਮਝਾ ਦਿੱਤਾ ਉਹ ਜਿਹੜਾ ਬਦਦਾ ਹੁੰਦਾ ਨੇ ਜੇ ਜੁ ਕਾਰੇ ਆ ਜਾਂ ਹੋਰ ਸੁਣੀ ਹੋਏ ਆਪਾਂ ਕਹਿੰਦੇ ਫਲਾਣੇ ਦਾ ਆਦਮੀ ਉਹਦੀ ਗੱਲ ਮੰਨਦਾ ਉਹਦੀ ਗੱਲ ਨੂੰ ਠੀਕ ਮੰਨਦਾ ਉਹਦੀ ਅਗਿਆਚ ਉਹ ਮੇਰਾ ਲੀਡਰ ਹੈ ਕਹਿੰਦੇ ਜੀ ਤੇ ਲੀਡਰ ਹੈ ਉਹ ਤੇ ਅਗਿਆਚਾ ਉਹ ਕਹਿੰਦਾ ਉਹ ਮੇਰਾ ਆਦਮੀ ਕਹਿੰਦੇ ਜੀ ਜਿਹੜਾ ਜਿਹਦੀ ਪੋਲਿਸੀ ਨੂੰ ਮੰਨਦਾ रामदीक का पॉलिसी कर ले दी नहीं है सचखंडी पॉलिसी है पॉलिसी पॉलिसी हां पहचानता रहा है उस पॉलिसी वो पॉलिसी है वो आ जाए थे अपनी पॉलिसी नु है पॉलिसी वाली पॉलिसी वाली गल है झगड़ा है थे ਅਡਰ ਜਿਹੜੀ ਪਾਰਟੀ ਦੀ ਪਾਲਿਸੀ ਉਹ ਕਰ ਉਹ ਬੱਤਾ ਪਾਲਿਸੀ ਹੋਈ ਅਡਰੁਰਕੀ ਪੜੀ ਉੜੀ ਚਲਾਵੇ ਅਸੀਂ ਬੜੇ ਸਾਡੇ ਉਹ ਵਿਚਾਰਤਾਂ ਵਧੀਏ ਠੀਕ ਪਰ ਜਦੋਂ ਕੁਰਬਾਨੀ ਦੇ ਵਿੱਚ ਗੁਰਮਖਾਓ ਆਪਣੀ ਪਾਲਿਸੀ ਨਹੀਂ ਚਲਉ ਉਹ ਸੱਚਖੰਡ ਦੀ ਪਾਲਿਸੀ ਨੂੰ ਦੱਸਦਾ ਹਾਈਲਾਈਟ ਕਰਦਾ ਸਿਰ ਹਾਈਲਾਈਟ ਕਰਦਾ ਆਪਣੀ ਵੜੀ ਦੀ ਘਟਦਾ ਹੈ ਜਿਹੜੀ ਆਪਣੀ ਪਾਲਿਸੀ ਘੜਦਾ ਬਣਵਾਤਾ ਜਿਹੜੀ ਸੱਚ ਕਰਨ ਦੀ ਪਾਲਿਸੀ ਨੂੰ ਹਾਈਲਾਈਟ ਕਰਦਾ ਬੰਦਾ ਉਹਨੂੰ ਹਾਈਲਾਈਟ ਇਹ ਸੱਚ ਕਰਨ ਦੀ ਪਾਲਿਸੀ ਨੇ ਹਾਈਲਾਈਟ ਕੀਤੀ ਗੱਲ ਭੋਤਾਂ ਦੀ ਗੱਲ ਨਹੀਂ ਹੈ ਇਸ ਕਰਕੇ ਮਿਲਦੀ ਹੈ ਸਾਰਿਆਂ ਦੀ ਗੱਲ ਜਦੋਂ ਮੈਂ ਆਪਣੀ ਗੱਲ ਕਰਦੀ ਹਾਂ ਤਾਂ ਮੇਰੀ ਵੱਖਰੀ ਹੋਊਗੀ ਫਿਰ ਤੂੰ ਇਹ ਜਦੂਆ ਤੇ ਚਾਹੂਗਾ ਉਹ ਸੰਸ਼ੋਧਨ ਕਰੂਗਾ ਹਾਈਲਾਈਟ ਜਾਂ ਹੋਊਗੀ ਜਿਵੇਂ ਬ੍ਰਹਮਾ ਦੇ ਚਾਰ ਚੇਲੇ ਨੇ ਚਾਰ ਤਰ੍ਹਾਂ ਦੇ ਵਿਚਾਰਦਾ ਚੇਲੇ ਕੋ ਗੁਰੂ ਦੇ ਨੇ ਗੁਰੂ ਦੇ ਚੇਲੇ ਨੇ ਵੀ ਇਨਸ਼ਾਅੱਲਾ ਕਿਉਂਕਿ ਇਹ ਗੁਰੂ ਸੱਚਾ ਉਹਨਾਂ ਦਾ ਬ੍ਰਹਮਾ ਝੂਠਾ ਉਹ ਕਿਹੜੇ ਨੇ ਉਹ ਸੰਸਾਰੀ ਗਿਆਨ ਤੈਨੂੰ ਸੰਸਾਰੀ ਗਿਆਨ ਵਾਲੇ ਨੇ ਚੌਥਾ ਬ੍ਰਹਮ ਗਿਆਨੀ ਜਿਹੜੀ ਵਿਚਾਰਦਾ ਹੈ ਕਿ ਕਾਇ ਜਿਹੜੇ ਗਿਆਨ ਉਹ ਵਿਚਾਰਦਾ ਜਿੰਨਾ ਗਿਆਨ ਨੇ ਡਿਸਕਵਰ ਕਰ ਲਿਆ ਉਹ ਤਾਂ ਉਹ ਕੀਤਾ ਖਰਾਇਆ ਮਿਲ ਗਿਆ ਗਾਂਦ ਉਹਨੇ ਦੱਸ ਦਿੱਤਾ ਇੱਥੇ ਕੀਤਾ ਖਰਾਇਆ ਕੁਝ ਨਹੀਂ ਮਿਲਦਾ ਇਹ ਗੱਲ ਕੱਲ ਮਸਕੀਨ ਵੀ ਕਰਦਾ ਸੀ ਪਰ ਉਹਨੂੰ ਸਮਝ ਨਹੀਂ ਆਈ ਇਹ ਹੁੰਦਾ ਕੀ ਹੈ ਉਹਨੂੰ ਸਮਝ ਨਹੀਂ ਆ ਗਈ ਦੋ। ਕਹਿੰਦਾ ਉਹ ਦਿਨ ਜਿਹੜਾ ਪ੍ਰੈਕਟੀਕਲ ਹੋਵੇ ਜਿਹਦੇ ਕੋਲ। ਵੈਸੇ ਅਸੀਂ ਇੱਥੇ ਜਿਹੜਾ ਇੱਥੇ ਦੱਸਿਆ ਸਭ ਕੁਝ ਹੋ ਗਿਆ। ਇਹ ਮਾਇਆ ਦਾ ਗਿਆਨ ਤਾਂ ਹੈ ਨਹੀਂ। ਇਹ ਆਪਣੇ ਆਪ ਨੂੰ ਘੜ ਤੁਸੀਂ। ਕਿੰਨਾ ਕੋਈ ਘੜਿਆ ਹੋਇਆ ਹੈ ਪਹਿਲਾਂ। ਕਿੰਨਾ ਘੜਣ ਵਾਲਾ ਰਹਿੰਦਾ ਇਹ ਅਲੱਗ-ਅਲੱਗ ਪ੍ਰਸਤਾਵ ਦੀ। ਠੀਕ ਹੈ? ਤੇ ਆਪਣੇ ਆਪ ਨੂੰ ਕਢ ਲੈ ਜਿੰਨਾ ਬਾਕੀ ਹੈ ਤੁਹਾਡੇ ਕਢ ਲੈ ਪੈਣ ਕੜਿਆ ਕੜਾਇਆ ਤਾਂ ਜਿੰਨਾ ਹੈਗਾ ਤੂੰ ਹੈਗਾ ਹੀ ਐ ਕੜ ਕੇ ਇੱਕ ਵਸਤੇ ਤੇ ਚਲੇ ਜਾਣਾ ਪਹਿਲਾਂ ਸਦੋ ਇੱਕ ਵਸਤੇ ਤੇ ਜਾਣਾ ਪਤਾਂ ਸਾਰੀਆਂ ਹੀ ਨੇ ਪਰ ਜੇ ਕੋਈ ਕਢ ਕਢ ਹੋਣਾ ਚਾਹੇ ਪਤਾ ਝਾਰੀਏ ਕਹਿੰਦੇ ਲੋਭ ਨਹੀਂ ਚੰਗਾ ਫਲਾਣਾ ਨਹੀਂ ਚੰਗਾ ਲੋਭ ਨਹੀਂ ਚੰਗਾ ਕਰੋਧ ਨਹੀਂ ਚੰਗਾ ਪਰ ਕੋਈ ਛੱਡੇ ਵੀ ਬੰਦਾ ਕੋਈ ਵੀ ਨਹੀਂ ਇਹਨਾਂ ਗੱਲਾਂ ਨੂੰ ਚਾਰੇ ਪੰਜੇ ਬਾੜੇ ਨੇ ਹੈ ਉੱਪਰ ਲੋਭ ਵੀ ਬਾੜਾ ਉਹ ਵੀ ਬਾੜਾ ਲੋਗਾਂ ਦਾ ਹੰਕਾਰ ਕਹਿੰਦੀ ਹੈ ਕਹਿੰਦੀ ਰਹੇ ਹੰਕਾਰ ਵਾਲੇ ਨੂੰ ਗਿਆਨੀ ਹੈ ਜੀ ਹੰਕਾਰ ਵਾਲੇ ਕੋਈ ਗੱਲ ਨਹੀਂ ਹੈ ਜੇ ਹੰਕਾਰ ਵਾਲੇ ਗਿਆਨ ਹੋਵੇ ਹੋ ਮੈਂ বুঝਾ ਤਾਂ ਨੂੰ ਕੋਈ ਗੱਲ ਨਹੀਂ ਔਰ ਬੱਸ ਨੂੰ ਗੱਲ ਜੀ ਹੰਕਾਰ ਹੁੰਦਾ ਕੀ ਐਸੇ ਕਰਕੇ ਜੋ ਕੁਛ ਇਹ ਕਰ ਰਹੇ ਨੇ ਬੱਤਾਂ ਵਾਲੇ ਉਹਦਾ ਕੀ ਹੁੰਦਾ ਉਹਦਾ ਹੰਕਾਰ ਬੜੀ ਜਾਂਦਾ ਤਾਂ ਕਰ ਬੈ ਲੱਗ ਤੱਪ ਕਰਦੇ ਨੇ ਉਹਦਾ ਅਹੰਕਾਰ ਬਣ ਜਾਂਦਾ ਹੈ ਜਪ ਕਰਦੇ ਨੇ ਉਹਦਾ ਹੰਕਾਰ ਬਣ ਜਾਂਦਾ ਹੈ দান ਕਰਦੇ ਨੇ ਉਹਦਾ ਹੰਕਾਰ ਬਣ ਜਾਂਦਾ ਹੈ ਪੂਰਨ ਕਰਦੇ ਹੰਕਾਰ ਉਹਦਾ ਜੇ ਕੋ ਪਾਵੇ ਤਿਲ ਕਿਉਂਕਿ ਸੰਸਾਰੀ ਵਿੜਿਆਈ ਜਿਹੜੀ ਹੈ ਅਹੰਕਾਰ ਜਵਤ ਹੋ ਜਾਂਦੀ ਹੈ ਪਹਿਲਾਂ ਇਹ ਸੰਸਾਰੀ ਵਿੜਿਆਈ ਮਿਲਦੀ ਹੈ ਉਹ ਬਦਲ ਕੇ संसारी बढ़ाई ओगड़ में बदल गई बिल्कुल गुणा दे बटे है है ओगड़ ओगड़ में बदल जाती है <coughs> तो सारी बढ़ाई प्राप्त हो के ओगड़ में बदल जो है जैसे सारी बढ़ाई जैसी मान ली ओगड़ इस करके कुल संसारी बढ़ाई के तो कुल हा ਲੱਗੇ ਬੜੇ ਲalach ਚੂਹਾ ਖੱਟਣੋਂ ਬਾਭੀ ਟਿੱਕੜ ਬੰਨੇ ਛੱਜ ਦੁਨੀਆ ਦੀ ਮਿਠਾਈ ਲੈਣੀ ਬੜੀ ਸਰਕਾਰਾਂ ਤੋਂ ਮਿਠਾਈ ਦਿੰਦੀਆਂ ਅੜੇ ਬੈਠੋ ਦਿੰਦੇ ਸਭ ਦੁਨੀਆ ਦੀ ਕੋਈ ਸਰਕਾਰ ਦੇ ਕਰੋ ਦੁਨੀਆ ਦੀ ਦੇ ਲਈ ਹੋਵੇ ਰਮਦਾਸ ਨੇ ਲਈ ਹੋਵੇ ਉਨੀ ਨਾਲੇ ਦਾ ਖੇਤਰਫੈਰ ਨੇ ਵੜਿਆ ਇਹਨੂੰ ਜੇ ਵੜਿਆਈ ਦਿੰਦੇ ਨੇ ਤਾਂ ਉਹ ਤੇ ਇਹਨਾਂ ਨੂੰ ਖਤਰਾ ਹੈ ਦਸਾਂ ਪਾਇਸ਼ਰਿਕ ਹੈ ਜੋ ਉਹ ਕੋ ਪਰਮੇਸ਼ਰ ਉਸ ਤੇ ਸਭ ਨਰਕ ਨੂੰ ਮੈਂ ਉਹ ਪਰਮਪੁਰਖ ਦਾ ਦਾਸਾ ਦੇਖਣਾ ਹੈ ਜੇ ਵੀ ਦਵੇ ਉਹ ਆਪ ਨਰਕੇ ਚਲੇ ਜਾਓ ਸਾਨੂੰ ਤਾਂ ਵੜਿਆਈ ਅਸੀਂ ਤਾਂ ਲੈਣੀ ਜੇ ਤੇ ਸਾਨੂੰ ਕੋਈ ਚੀਜ਼ ਦੇਣ ਜਾਈਓ ਨਾ ਲਵੇ ਕੋਈ ਬੜੀ ਲੈ ਲਓ ਉਹ ਵੜਿਆਈ ਦੇਣ ਭਗਤ ਤੋਂ ਵੱਡਾ ਕੋਈ ਹੈ ਨਹੀਂ ਬੜਿਆਈ ਨੂੰ ਦਊ ਕੌਣ ਭਗਤ ਤਾਂ ਐਂ ਡਰਦੇ ਨੇ ਲੋਕ ਵੀ ਇਹ ਨੂੰ ਕੁਛ ਕਹਿਤਾ ਪਤਾ ਨਹੀਂ ਉਹ ਕੀ ਕਰਦੇ ਉਹਦੀ ਬੁਗਿਆਈ ਨਹੀਂ ਪਤਾ ਹੁੰਦਾ ਉਹਨਾਂ ਨੂੰ ਵੀ ਤੱਕ ਆਈਓ ਤੂੰ ਵੀ ਡਰ ਜਾਂਦੇ ਇਹ ਸੰਤਾਨ ਤੋਂ ਆਹ ਲੋਕਾਂ ਦੀ ਸੰਤਾਨ ਨਾਲ ਸੰਬੰਧ ਕੇ ਗੱਲ ਕਰਦੀ ਗਈ ਉਹ ਪਤਾ ਨਹੀਂ ਕੀ ਗੈਰ ਨੂੰ ਕੋਈ ਡਰਾਈਵਰ ਦੇ ਇਹ ਦੋਵਾਂ ਉਹ ਜੋ ਕਹਿਣ ਨੂੰ ਹੋ ਜਾਂਦਾ ਇਸ ਕਰਕੇ ਉਹਨੂੰ ਕੋਈ 7 ਵਜੇ ਨੂੰ ਕਹੀ ਜਾਵੇ ਨਾ ਦਿਖਰੇਗਾ ਨੂੰ ਬੜਾਈ ਕੌਣ ਦਿੰਦਾ ਹੁੰਦਾ ਆਪ ਤੋਂ ਵੱਡਾ ਦਿੰਦਾ ਹੁੰਦਾ ਹੈ ਤੋਂ ਵੱਡਾ ਜਿਹੜਾ ਹੈ ਉਹਦੀ ਬੜਾਈ ਹੁੰਦੀ ਹੈ ਫਿਰ ਛੋੜੇ ਦੀ ਬੜਾਈ ਕਿਉਂ ਹੁੰਦੀ ਇਸ ਗੱਲ ਦਾ ਨਾਂ ਕਰ ਵੱਡੇ ਕੀਆਂ ਵਡਿਆਈਆਂ ਕੁਛ ਪੜਨਾ ਪੈ ਜ ਪੜਨਾ ਕਰਨਾ ਹੈ ਜਿਹੜਾ ਵੱਡਾ ਹੈ ਵੱਡੇ ਹੀ ਦੀ ਵਡਿਆਈ ਨੂੰ ਵਡਿਆਈ ਸਮਝਦੇ ਨੇ ਨੇ ਸੰਤਾਰੀ ਹੈ ਮਨੁੱਖਾਂ ਦਾ ਡੇੜੇ ਵੀ ਨਹੀਂ ਜਾਂਦੇ ਕੋਲੋਂ ਆ ਨਿਸ਼ਾਨ ਹਾਂ ਜੇ ਨਹੀਂ ਇਹ ਜਾਂਦੇ ਹੀ ਨਹੀਂ ਉੱਥੇ। ਡਰਦੇ ਤਾਂ ਨਹੀਂ ਐ ਜਾਂਦੇ ਹੀ ਨਹੀਂ। ਜਿਹੜੇ ਦੇ। ਕੀ ਇਹਨਾਂ ਦੇ ਹੌਲ ਜਿਹੜਾ ਦੇ ਦੇਣਗੇ? ਇਹਦੇ ਕੋਲ ਹੈ ਕੀ ਜਿਹੜਾ ਦੇ ਦੇਣਗੇ? ਜਿਹੜਾ ਕੋਈ ਇਹਨਾਂ ਨੂੰ ਚਾਹੀਦਾ ਨਹੀਂ। ਜਿਹੜਾ ਉਹਨੂੰ ਚਾਹੀਦਾ ਉਹ ਕੋਲ ਹੈ ਨਹੀਂ। ਪਰ ਉਹਨੂੰ ਜੋ ਚਾਹੀਦਾ ਹੈ ਨਹੀਂ ਸੰਸਾਰ ਕੋਲ। ਦੁਨੀਆ ਨੂੰ ਕੋਈ ਹੈ ਉਹਦੇ ਬਦਲ ਬਦਲ ਨਹੀਂ ਦੁਨੀਆ ਕੇ ਬੜੇ ਕੇ ਬਸ ਅੰਦਰ ਦੀ ਜਾਲ ਚ ਫਸਿਆ ਅੰਦਰ ਤੈਨੂੰ ਜਾਣਾ ਕੀ ਹੈ ਉਹਨਾਂ ਨੇ ਕੀ ਲਗਦਾ ਤੇ ਜਿਹੜਾ ਆਪ ਸੰਤ ਹੈ ਉਹ ਸਭ ਸੰਤ ਨਹੀਂ ਬਣਾਰ ਇਸ ਠੱਗ ਜਿਹੜਾ ਸੰਤ ਹੋ ਰਾ ਹੈ ਠੱਗ ਹੈ ਜਿਹੜਾ ਹਰਕਾ ਸੰਤ ਹੈ ਉਹਦਾ ਮਤਲਬ ਕੀ ਹੈ ਉਹ ਜੇ ਸ਼ਾਂਤੀ ਉਹਨੂੰ ਮਿਲ ਗਿਆ ਹਰ ਦੇ ਨਾਲ ਜਿਹੜੇ ਤੇ ਮਿਲ ਗਿਆ ਹਰਕੇ ਸੰਤ ਦਾ ਮਤਲਬ ਹੈ ਜਿਹਨੇ ਜਹਾਨ ਜਿੰਨਾ ਜਿਹੜਾ ਆਪਣੇ ਅੰਦਰ ਜੁੜਿਆ ਹੈ ਉਹਨੇ ਸੰਤ ਹੈ ਉਹ ਸ਼ਾਂਤੀ ਉਹਦੇ ਅੰਦਰ ਜャ ਉਹਨੇ ਛੜਤਾ ਜਿੰਨਾ ਜਿਹਨ ਸਭ ਉਹ ਵਿਰਛੇ ਨੂੰ ਲੁਪਟਿਆ ਹੋਇਆ ਹੈ ਜੰਦਰ ਦੇ ਨੂੰ ਸ਼ਾਂਤੀ ਹੈ ਸੰਤ ਅਸਲ ਦੇ ਵਿੱਚ ਚਰਨੰਦਨ ਦਾ ਗ੍ਰਫਤ ਹੈ ਸਪੋਜ਼ਰ ਲੁਕਿਆ ਹੋਇਆ ਹੈ ਬੰ ਜਿੰਨਾ ਜਿਹਦੇ ਨਾਲ ਅਟੈਚਮੈਂਟ ਹੈ ਉਹਦੀ ਉਹਦੇ ਨਾਲ ਜੁੜਿਆ ਹੋਇਆ ਤਾਂ ਇਹਨੂੰ ਸ਼ਾਂਤੀ ਹੈ ਵਰਨਾ ਇਹ ਅਸੰਤ ਹੈ ਅਸੰਤ ਨੇ ਸੰਤ ਬਣ ਲੈ ਉਹ ਕੱਪੜੇ ਪਾ ਕੇ ਕਹਿੰਦੇ ਅਸੀਂ ਬਣ ਗਏ ਉਹ ਕਹਿੰਦਾ ਕਿੰਦਰ ਜਿਹੜਾ ਸੰਤ ਨਾਲ ਜੁੜ ਕੇ ਸ਼ਾਂਤੀ ਮਿਲਣੀ ਦੋਹਾਂ ਦਾ ਫਰਕ ਬੇਸਿਕ ਹੈ ਬੇਸਿਕ ਵਰਤ ਹੈ ਤੁਹਾਨੂੰ ਕੱਪੜੇ ਬਦਲ ਕੇ ਸੰਤ ਬਣ ਜਾਣਾ ਜੀ ਇਹ ਕੱਪੜੇ ਖੋਦਣ ਫਿਰ ਸੰਤ ਰਹੇ ਨੇ ਕੀ ਮਾਰੇ ਬਾਹਰੋਂ ਕਹਾਉਂਦੇ ਨੇ ਕਹਾਉਂਦੇ ਵੀ ਨਹੀਂ ਨਾ ਹੋਵੇ ਫਿਰ ਤਾਂ ਸੰਤ ਨਹੀਂ ਪਰ ਅਜਨਾਨ ਹੁੰਦੇ ਬਾਣਾ ਲਾਣ ਦੇ ਮਨਮੁਖ ਬਣ ਕੇ ਨਾ ਹੁੰਦੇ ਰਹੋ ਗੁਰਮੁਖਾਂ ਦਾ ਜਿਹੜਾ ਉਹ ਰੋਦਨ ਆਉਂਦਾ ਉਹ ਸਰੀਰ ਦਾ ਇਸ਼ਨਾਨ ਜਿਹੜਾ ਹੁੰਦਾ ਉਹਦਾ ਬਾਣਾ ਨਹੀਂ ਹੁੰਦਾ ਉਹਨਾਂ ਦੇ ਸੜੇ ਬਾਣੇ ਦਾ ਇਸ਼ਨਾਨ ਹੁੰਦਾ ਤਾਂ ਹਸਲਦਾ ਸੰਤ ਸੜੇ ਬਾਣੇ ਇਸ਼ਨਾਨ ਕਰਦੇ ਨੇ ਕਈ ਸੰਤ ਭੜੇ ਆਣ ਹੁੰਦਾ ਨਹੀਂ ਨਹੀਂ ਦੱਸੂਗਾ ਹੁੰਦਾ ਹੁੰਦਾ ਕਿਵੇਂ ਕਿਹੜਾ ਤੁਸੀਂ ਸੱਚ पहन ਲਿਆ ਉਹ ਲਾਉਣਾ ਨਹੀਂ ਉਹਦੇ ਉੱਤੇ ਹੀ ਹੋਰ ਚੜ੍ਹਨਾ ਇਸ਼ਾਨ ਕਰਨਾ ਕਿਹੜਾ ਸੱਚ ਉਤਾਰਨ ਕਰ ਲਿਆ ਉਹਦੇ ਜਿਹੜਾ ਭੈੜਾ ਕੱਢਣੀ ਹੈ ਉਹਦੇ ਉੱਤੇ ਹੀ ਕਿਹੜਾ ਗਿਆਨ ਪਹਿਲਾਂ ਲੈ ਲਿਆ ਉਸੇ ਤੇ ਹੋਰ ਗਿਆਨ ਚੜ੍ਹਨਾ ਉਸੇ ਦਾ ਇਸ਼ਾਨ ਹੈ ਨਾਮ ਨਾਲ ਹੋਣਾ ਜੋ ਨਾਮ ਆਈ ਗਿਆ ਨਾ ਦਰਬੋਜ਼ੀ ਹੋਰ ਪਿੰਡਾਂ ਤੋਂ ਨਾ ਜਿਹਨਾਂ ਨਾਲ ਗਏ ਹੀ ਪਿੰਡਾਂ ਪਿੰਡਾਂ ਤੋਂ ਨਾ ਹਰਾਨ ਹੁੰਦਾ ਸਭ ਆਇਆ ਰਵਾਇਤ ਹੁੰਦੀ ਹੈ ਅੱਜ ਚੇਰਾਖੀ ਬੈਣ ਵੀ ਨਾਮ ਦਾ ਕਰਦੇ ਨੇ ਲੈਂਦੇ ਵੀ ਨਾਮ ਦਾ ਦਿੰਦੇ ਵੀ ਨਾਮ ਦਾ ਲੈਂਦੇ ਵੀ ਨਿਸ਼ਾਨਾਂ ਦੀਓ ਜੇ ਕਰਦੇ ਅਛਰਾਬ ਸਰੀਰ ਦਾ ਤਾਂ ਮਤਲਬ ਹੀ ਉੱਥੇ ਉਹ ਸੜੇ ਬਣ ਦਲਾ શરીਰ ਬਾਣੋਂ ਨਹੀਂ ਲਹੁੰਦਾ ਕਦੇ ਇਹ ਬਾਹਲਾ ਕਪੜਾ ਹੈ ਇਹ ਕਪੜਾ ਧੋਦੇ ਨੇ ਪਤਾ ਕਪੜਾ ਹੈ ਇਹ ਕਪੜੇ ਤੇ ਹੋਰ ਬਣ ਲਾ ਤੇ ਕਪੜਾ ਝੜ ਗਏ ਸੰਤ ਬਣਦੇ ਨੇ ਚੱਦ ਬਣ ਜਿਵੇਂ ਜਿੱਦ ਜਿੱਦ ਤੇ ਭਾਈ ਹੋਰ ਕਾਗੇ ਝੜਦੇ ਨੇ ਕਢਾਉਂਦੀ ਜਿੰਦ ਕਾਦੇ ਵਾਸਤੇ ਉਹਦੀ ਪ੍ਰੋਡਕਸ਼ਨ ਵਾਸਤੇ ਉਹ ਤੇ ਹੋਰ ਇੱਕ ਝੜਤਾ ਆਪਾਂ ਇਹ ਤਾਂ ਜਲਦ ਤੇ ਜਲਦ ਜਾਣੀ ਹੋਈ ਹੈ ਨਾ ਜੀ ਜਲਦ ਤੇ